ਬ੍ਰਿਤੀ ਸਾਕਤ ਕੀ ਆਰਜਾ ਸਾਥ ਬਿਨਾ ਅਡੈਰੀ ਕਹਿ ਨੋ ਹੋਬੂ ਦੀ ਸੁਚਾਰਪਾ ਬ੍ਰਿਤੀ ਸਾਕਤ ਕੇ ਆਰਜਾ ਸਾਕਤ ਉਹ ਜਿਹੜੀ ਉਮਰ ਨਿਕਲ ਰਹੀ ਜੇ ਜੋ ਦਾ ਖਰਚ ਹੋ ਰਿਹਾ ਹੈ ਉਮਰ ਦਾ ਹਿੱਸਾ ਗਾਇਬ ਉਹ ਜਾ ਰਿਹਾ ਲਫਤ ਜਾ ਰਿਹਾ ਅਰਥ ਹੀ ਜਾ ਰਿਹਾ ਕੋਈ ਨੂੰ ਲਾਭ ਨਹੀਂ ਲੋਕ ਤਾਂ ਕਹਾਂਗਾ ਯਾਦਾ ਜੇ ਉਹ ਕਬ ਨਾ ਹੋਵੇ ਹੋਰ ਕੁਝ ਵੀ ਹੋਵੇ ਬਾਕੀ ਉਹ ਵੀ ਤਾਂ ਦਿੱਤੀ ਸ਼ਕਤ ਕੀ ਆ ਗਿਆ ਸ਼ਕਤ ਕੌਣ ਲੈ ਸ਼ਕਤ ਕੀ ਆ ਗਿਆ ਬੱਚੇ ਸਾਰੇ ਵਿੱਚ ਹੈ ਸ਼ਕਤ ਦੀ ਸ਼ਕਤ ਮੋਟੇ ਦਾ ਉਸ ਜਿਹੜਾ ਆਪਣਾ ਬਾਣ ਚੱਲਦਾ ਸਾਨੂੰ ਗੁਰੇ ਬਾਣ ਚੱਲਦਾ ਉਹ ਹੱਤ ਸਾਕਤ ਮਰਾਂ ਸੰਤ ਜਪ ਜੀਣਾ ਹੱਤ ਔਰ ਸਾਕਤ ਦੋ ਇਹ ਸਮਝੋ ਆਪੋ ਰੋਣ ਦੀ ਸ਼ਕਤੀ ਹੈ ਸਾਕਤ ਗਰਸਤ ਹੈ ਹੰਕਾਰ ਤੇ ਸੰਤ ਵਿੱਚ ਹੰਕਾਰ ਹੈ ਨਾਮ ਦਾ ਵਿਰੋਧ ਕਰਦਾ ਹੰ ਤੁੰ ਦਾ ਵਿਰੋਧ ਕਰਦਾ ਜਿਹੜਾ ਸੰਤ ਦਾ ਹੰਕਾਰ ਤੋਂ ਮੁਕਤ ਉਹ ਵਿਰੋਧ ਕਰਦਾ ਉਹਨੇ ਪਾਣੇ ਅੱਗੇ ਸਿਹਤ ਸਰਾਇਤਾ ਦਿੱਤਾ ਸੱਚ ਪਾਇਆ ਹੋਇਆ ਆਪਣੀ ਵਰਗੀ ਚੱਤੀ ਹੋਣੀ ਉਹ ਸੰਤ ਦਾ ਆਪਣੀ ਮਰਜ਼ੀ ਤੇ ਅੱਗਣ ਵਾਲਾ ਸੰਤ ਹੈ ਆਪਣੀ ਵਰਦੀ ਮੁਤਾਬਕ ਜੰਮ ਰੋੜਾ ਸੰਤ ਕੰਪਲੀਟਰ ਸੰਜਾਇਆ ਬਾਸ ਕੰਪਲੀਟਰ ਤਾਂ ਜੀ ਬਾਸ ਨਾ ਕੋਈ ਢੇਠ ਹੈ ਸੰਤ ਦਾ ਨਾ ਕੋਈ ਸੰਤ ਦਾ ਹੋਰ ਕੋਈ ਇਹ ਤਾਂ ਮਤਲਬ ਰੂਪ ਹੈ ਜੇ ਮੁਕਤੇ ਪਾਸ ਚੱਲਦੇ ਹਾਂ ਤਾਂ ਸੰਤ ਕੋਈ ਵੀ ਹੈ ਕੋਈ ਜੇ ਆਪਣੇ ਬਾਣੀ ਚੱਲਦਾ ਫਿਰ ਸੋ ਆਪਣੇ ਬਾਣੀ ਜੱਲਣ ਦੀ ਜਿਹੜੇ ਆਪਣੇ ਬਾਣੀ ਚੱਲਣ ਦੀ ਸਿੱਖਿਆ ਦਾ ਨਹੀਂ ਕੋਈ ਦੰਦਾ ਆਪਣੇ ਬਾਣੀ ਚੱਲਣ ਤੇ ਜਿਹੜਾ ਨਹੀਂ ਹਟਾਉਂਦਾ ਉਹ ਸਾਥਕ ਆਪਣੇ ਬਾਣੀ ਚੱਲਣ ਤੇ ਜਿਹੜਾ ਹਟਾਉਂਦਾ ਨਹੀਂ ਉਹ ਸਾਥਕ ਹੈ ਜਿਹੜਾ ਆਪਣੇ ਬਾਣੀ ਚੱਲਣ ਤੇ ਹਟਾਉਂਦਾ ਨਹੀਂ ਉਹ ਤੇਰੀਆਂ ਮਨੋਂ ਕਾਮਨਾ ਪੂਰੀਆਂ ਕਰਦੀ ਅਰਦਾਸ ਕਰਦੀ ਇਹ ਤੇ ਰਿਆ ਮਨੋਗਾਵਨ ਐ ਤੇ ਪੂਰੀਆਂ ਬਨੋ ਕਾਪਣਾ ਪੂਰੀਆਂ ਕਰਨ ਵਾਲਾ ਸਾਥ ਚ ਉਹ ਬਨੋ ਕਾਪਣਾ ਤਾਂ ਫੇਰੀ ਮਦਿਆਂ ਨਹੀਂ ਨਾ ਤਾਉਂਦਾ ਉਹ ਮਿਹਣੀਆ ਛਾਵਾਂ ਨੇ ਜੋ ਛਾਵਾਂ ਦਾ ਸਾਧਗੀ ਹੁੰਦੀ ਆ ਸਾਧਗੀ ਦਾ ਪਿੱਛਾ ਹੁੰਦੀ ਨਹੀਂ ਕੋਈ ਸੰਤ ਹੀ ਛਾਪ ਹੈ ਵੀ ਸਰਦ ਨੂੰ ਜੇ ਕੋਈ ਖਾਇ ਵੀ ਸਭ ਦਾ ਨਾਮ ਦੀ ਭੁੱਖ ਜੇ ਕੋਈ ਦਿਮਾਗ ਹੈ ਵੀ ਉਹਨੇ ਡਿਮਾਂਡ ਜੇ ਤੁਹਾਡਾ ਨਾ ਨਾ ਨਾ ਕਮੰਡ ਹੈ ਨਾ ਹੁਮਦਾਨ ਕਿਰਪਾ ਕਰੋ ਉਹ ਤਾਂ ਡਿਮਾਂਡ ਹੈ ਨਾ ਮੀਂਹ ਡਿਵਾਂਡ ਹੈ ਜੇ ਇਹਦੇ علاوہ ਕੋਈ ਡਿਵਾਂਡ ਹੈ ਬਿਰੋ ਕਾਮਨਾ ਕਾਮਨਾਡ ਮਾੜਾ ਨਾਵਦੀ ਕਾਮਨਾ ਨਹੀਂ ਹੁੰਦੀ ਨਾਵਦੀ ਕਾਮਨਾ ਨਹੀਂ ਲਿਖੀ ਇਹ ਤਾਂ ਇੱਛਾ ਤਾਂ ਹੁੰਦੀ ਹੈ ਨਾਵਦੀ ਕੋ ਖੰਦੀ ਹੈ ਸੱਚੇ ਰੋਗ ਕੀ ਲੱਗਾ ਕੌਮਨਾ ਦੀ ਕੌਮਨਾ ਬੜਾ ਦੀ ਕੌਮਨਾ ਬੱਧੈ ਨਾਲੀ ਸੰਭਦ ਹੈ ਇੱਛਾ ਚਿਤ ਕੀ ਹੁੰਦੀ ਹੈ ਪਸੰਦ ਵੀ ਇੱਕ ਛਾ ਕੌਮਨਾ ਇਹ ਤੇ ਆਕੇ ਦੋ ਅੱਜ ਇੱਛਾ ਉੱਤੇ ਹੋਣੀ ਬੱਜੀ ਆਪਾਂ 'ਚ ਆਪਾਂ ਕਹਿੰਦੇ ਆਂ ਹਰਦੀ ਇੱਛਾ ਬੱਜੀ ਤਾਂ ਕੋਈ ਨਹੀਂ ਬਸ ਇੱਛਾ ਕੌਮਨਾ ਮਨ 'ਚ ਇੱਛਾ ਨੂੰ ਕਹਾਵਣਾ ਨਾ ਜਿਹਨੂੰ ਨਾਮ ਕਹਿੰਦਾ ਦੀਸ਼ ਜਿਹਦੇ ਕਹਾਇਆ ਬਿਚੇ ਕਹਾਵਣਾ ਹੀ ਹੁਮਨ ਨਾ ਜਿਹੜੀ ਮਨ ਦੇ ਵਿੱਚ ਇੱਛਾ ਉਹਦਾ ਨਾਮ ਕਹਾਵਣਾ ਜਿਹੜੀ ਦੋ ਅਲੱਗ ਅਲੱਗ ਲਾਹੂ ਨੇ ਸਾਨੂੰ ਇੱਛਾ ਕਹਾਵਣਾ ਦਾ ਜੁਗਦ ਪਹਿਲਾਂ ਨਾ ਡਿਕਸ਼ਨਰੀ ਦੇ ਸੰਬੋਧਕ ਉਹ ਰਹਾ ਹੋਏ ਚਿੱਤ ਇੱਛਾ ਕਹਾਂ ਤੇ ਬਿਲਕੁਲ ਸਹੀ ਗੱਲ ਕੀਤੀ ਦਸ ਪਾਸ਼ਾ ਨੇ कुछ संकेत कर हमरी करो हाथ दे रक्षा पूर्ण हो चित्त की इच्छा चित्त की हुदय इच्छा कामना वेक्टर यानी कामनाधीन कैसे भाव है हां अंगला वासना को कहते हैं कामना वासना है वासना के कितने प्रकार के हमारे ਇੱਛਾ ਕਿਸ ਕੋਈ ਪ੍ਰਕਾਰ ਦੀ ਹੈ ਇੱਛਾ ਕੋਈ ਪ੍ਰਕਾਰ ਦੀ ਹੋਏ ਇੱਛਾ ਆ ਹਾਂਜੀ ਜੇਤੇ ਸਾਖਤ ਕੀ ਅਰਜਾ ਵਿਰਤੀ ਸਾਖਤ ਕੀ ਅਰਜਾ ਸਾਖਤ ਕੌਣ ਕਾਮਨਾ ਰਖਣ ਵਾਲਾ ਸਾਖਤ ਮਨੋ ਕਾਮਨਾਵਾਂ ਪੂਰੀਆਂ ਕਰਨ ਵਾਲਾ ਠੇਕਾ ਕਰਨ ਵਾਲਾ ਸਾਖਤ ਮਨੋ ਕਾਮਨਾ ਪੂਰੀਆਂ ਕਰ ਦੂੰਗਾ ਇਹ ਗਰੰਟੀ ਕਰਨ ਵਾਲਾ ਥਾ ਤਾ ਸੰਤ ਨਹੀਂ ਹੈ ਉਹ ਸੰਤ ਕਹਿੰਦਾ ਤੇ ਉਹ ਤੋਹਫਾ ਕਰਦਾ ਸਭ ਆਇਆ ਕਰੋ ਉਹ ਮਾਇਆ ਦੀਆਂ ਕਾਮਨਾਵਾਂ ਪੂਰੀਆਂ ਕਰ ਦੂੰ ਚਲੋ ਕਰ ਵੀ ਦਵੇ ਜੇ ਪਰ ਉਹ ਜਿਹੜੀ ਸ਼ਾਂਤੀ ਦੀ ਉਹ ਬੁੱਕੀ ਕੋ ਕਾਮਨਾ ਅਧੇਨ ਕਿਵੇਂ ਪਾਵਾਂ ਭਗਵਾਨ ਕੋ ਭਗਵਾਨ ਤਾਰ ਨਹੀਂ ਜੋੜ ਸਕਦਾ ਭਗਵਾਨ ਦਾ ਬਰੋਧ ਕਰਦਾ ਹੋ ਤਾਂ ਆਪੇ ਉਹ ਤਾਂ ਹੀ ਜੋੜਦਾ ਆਪ ਬਣਿਆ ਹੋਇਆ ਆਪ ਨੇ ਨਾ ਮੇਰੇ ਨਾਲ ਜੁੜੂ ਉਹ ਨੂੰ ਤਾਂ ਬਣਿਆ ਹੈ ਉਹਦੀ ਪ੍ਰੋਬਲਮ ਹੈ ਨਾ ਲੋਕਾਂ ਦੀ ਅਸਲ ਦੇ ਵਿੱਚ ਗੱਲ ਇਹ ਦੀ ਹੈ ਪ੍ਰਚਾਰ ਕਰਦੇ ਝਗਦੇ ਲੋਗੇ ਇਹ ਪ੍ਰੋਬਲਮ ਕੀ ਹੈ ਕਿਉਂ ਨਹੀਂ ਕਰਦੇ ਫਿਰ غرੂਰ ਨਹੀਂ ਬਣਦਾ ਕਾਮਨਾ ਅਧੇਨ ਕਾਦੇ ਪਾਵਾਂ ਜੇ ਤੂੰ ਕਾਮਨਾ ਤੇ ਨਹੀਂ ਛੜਾਉਗਾ ਕਿਉਂ ਛੜਾਉਗਾ ਵੀ ਕੋਈ ਵਧੀਆ ਚੀਜ਼ ਦਊਗਾ ਇਹ ਦਊ ਵਧੀਆ ਨਾਲ ਚੀਜ਼ ਬੜਕੋ ਹਸਤਾ ਨਾਮੇ ਦਊਗਾ ਇਹ ਆਪਕੋ ਦਊਗਾ ਭਾਈ ਤੈਨੂੰ ਰੱਬ ਤੇ ਜ਼ਰਸ਼ਣ ਕਰੋ ਇਹੀ ਕਹੂਗਾ ਇਹ ਤਾਂ ਬਧੀਆ ਚੀਜ਼ ਤਾਂ ਰਹੀ ਹੈ। ਇਹ ਆ ਭਾਇਆ ਹੈ। ਮਾਇਆ ਦੇ ਵਿੱਚ ਵੀ ਲੋਕ ਤੇਨੂੰ ਲੋਕ ਦਾ ਰਾਜ ਹੈ ਚਲੋ। ਇੰਤੋਂ ਜ਼ਿਆਦਾ ਦਾ ਫਿਰ ਕੀ ਹੈ? ਉਹਦੇ ਬਾਅਦ ਫਿਰ ਕੀ ਹੈ? ਇਹ ਦੋਵੇਂ ਰਹਾ ਜਾ ਰਹੇ ਸਿਰਫ ਉਹ। ਸਿਰਫ ਉਹ ਦਾ ਉਹ ਸਦਾ ਹੀ ਰਹਾ ਜਾਂਦਾ। ਇਹ ਤਾਂ ਸਦਾ ਹੀ ਰਹਾ ਜੇ ਮਿਲ ਵੀ ਜਾਵੇ। ਉਹ ਸਦਾ ਹੀ ਰਾਜ ਸਦਾ ਪਾਸ਼ਾ ਹੀ ਰੱਬ ਦੀ ਕਹਿੰਦੇ ਆਪਾਂ ਉਹ ਸਦਾ ਪਾਸ਼ਾ ਹੀ ਹੋ ਜਾਂਦਾ ਜਦੋਂ ਬੰਸਤੇ ਕਾਲ ਨੂੰ ਜਿੱਤ ਲੈਂਦਾ ਉਹ ਉਸ ਹੁਕਮ ਨੂੰ ਜਿੱਤ ਲੈਂਦਾ ਜਿਹੜਾ ਮਾਇਆ ਦੇ ਉੱਤੇ ਲੱਗਦਾ ਉਸ ਹੁਕਮ ਤੋਂ ਉੱਪਰ ਹੋ ਜਾਂਦਾ ਉੱਪਰ ਹੋ ਜਾਂਦਾ ਹੈ ਕਹ ਲੋ ਉਸ ਹੁਕਮ ਤੋਂ ਉੱਪਰ ਹੋ ਜਾਂਦਾ ਕਾਲ ਨੂੰ ਜਿੱਤਣਾ ਮਧੁਰ ਕੀ ਹੈ ਹੁਕਮ ਤੇ ਦੋ ਪੱਖ ਦੇ ਜਿੱਤਾ ਕੰਟਰੋਲ ਕਰਦਾ ਮਾਇਆ ਨੂੰ ਜਰਾ ਰੋਗ ਵੀ ਮਾਇਆ ਨੂੰ ਉਹ ਉਹੀ وجہ ਨਾਲ ਹੈ ਜੱਪਣਾ ਬਰਨਾ ਹਰਨ ਨਾਲ ਜਿਹੜਾ ਫਰਨਾ ਉਹ ਇੱਕ ਬ੍ਰਹਮਤੀ ਦਾ ਨਾਸ ਕਰਨਾ ਹੁਕਮ ਹੈ ਮਨਪੋ ਦਾ ਹੁਕਮ ਉਹਨੂੰ ਜਿੱਤ ਰਿਹਾ ਮਾਨ ਪਾਉਂਦੇ ਹੁਕਮ ਨੂੰ ਜਿੱਤ ਲੈਂਦਾ ਏ ਕਾਲੂ ਮਾਨ ਪਾਉਂਦਾ ਹੁਕਮ ਇਹ ਕਾਲ ਜੇਲਾ ਖਾਦੀ ਮਰਦੀ ਹੈ ਹੀ ਗਾਲ ਹੈ ਇਹ ਮਰਦੀ ਆਪਣੀ ਨੂੰ ਜਿੱਤਦਾ ਉਹ ਕਾਲਪੁਰ ਕਹਿਲਾ ਮਰਦਾ ਮੰਨ ਲਿਆ ਉਹ ਗੰਦਾ ਉਹ ਕਹਦਾ ਪਰਮੇਸ਼ਰ ਦਾ ਮਾਨ ਮੂਰ ਨਹੀਂ ਬਰਦਰ ਦੀ ਗੱਲ ਕਹੀ ਹੋਈ ਇਹਨੂੰ ਕਹਿਦਾ ਰਸਾ ਸਭ ਜੋ ਕੁਝ ਸਭ ਕੁਝ ਵਸ ਤੇਰਾ ਭਾਨੂ ਆਹ ਦਾਦਾਈ ਵਰਤਦਾ ਜਦ ਕਹਿੰਦਾ ਜੋ ਮੈਂ ਕੀਤਾ ਸੋ ਮੈਂ ਪਾਇਆ ਭੰਗ ਕਿਹਦੇ ਵਰਤਿਆ ਸਾਡੇ ਵਰਤਿਆ ਜੋ ਸੀ ਕੀਤਾ ਪਾ ਲਿਆ ਜਿੰਨਾ ਜਹਾੜੀਆਂ ਲਾਈਆਂ ਉਦਾਂ ਮਿਲ ਗਈਆਂ ਨਹੀਂ ਜਿੰਨਾ ਟਾਈਮ ਤੁਸੀਂ ਲਾਇਆ ਉਹ ਟਾਈਮ ਆ ਉਗਲ ਗਿਆ ਨਾਲਾ ਘਟਲਾ ਕੱਟ ਮਿਲ ਗਿਆ ਜੋ ਮੈਂ ਕੀਤਾ ਸੋ ਮੈਂ ਪਾਇਆ ਜਦ ਕਹਿੰਦਾ કેરા મતલબી હે है, જો जो હે અપના દેખ લખ્યા આફ દેખ્યા ઇસે નાની લેખ લખ્યા જળા કહે બેદના દેખ્યા લખે સોપ કોવા સ એ જો લખਦਾ અપના આપે લખਦਾ ચાહે તા હે અપના જાણતા ચિટી સે આઈ ના લખ લે ચાહે તા અસત ચિટી સે આઈ ના લખા ઓડા કાળા ઉડે ચિત્તા ફેર ਜੀ ਆਪਾਂ ਕਾਲੇ ਖਰੋਨੇ ਚਿੱਟਾ ਫੇਰ ਦिए ਚਿੱਟੇ ਤੇ ਲਿਖਿਆ ਹੋਇਆ ਨਾ ਐਚਾ ਆਪਾਂ ਕਾਤੇ ਕੋ ਲਿਖ ਇਹ ਕਾਤਾ ਵਾਲਾ ਰਾਖਾ ਗਾ ਦਿਓ ਨੇ ਜਦੋਂ ਉਹ ਲੇਖ ਮਿਟ ਗਿਆ ਲੇਖ ਮਟਾਏ ਜਾਂਦੇ ਨਾ ਨਵੇਂ ਲਿਖੇ ਨਹੀਂ ਜਾਂਦੇ ਦੇਖਣਾ ਬੇਟੀ ਇਹ ਸੱਚੀ ਜੋਰ ਕਰਦਾ ਜਿਹੜਾ ਅੰਦਰ ਵਾਲਾ ਉਹ ਲੇਖ ਲਿਖਦਾ ਗੋਦੀ ਲਿਖਦਾ ਮਾਰ ਕੇ ਜਾਓ ਮਾਨ ਕਰਤਾਰ ਦਾ ਮਾਨ ਜੋ ਕਰਤਾਰ ਮੰਨ ਲੈਂਦਾ ਹੈ दैट इज ਮਾਨ ਜੋ ਨਾ ਮੰਨ ਲਿਆ ਹੋਇਆ ਤਾਂ ਮਨ ਬਣ ਗਿਆ ਜੋ ਨਾ ਮੰਨਿਆ ਉਹ ਮਨ ਬਣਾ ਲੈ ਉਹ ਮਨ ਲਿਆ ਵੀ ਆ ਮੇਰਾ ਗੁਰੂ ਹੈ ਬਣ ਗਿਆ ਹੋ ਤਾਂ ਗੁਰੂ ਬਣ ਗਿਆ ਉਹਨੇ ਮੰਨ ਲਿਆ ਵੀ ਮూర్ਤਿ ਚ ਮੈਨੂੰ ਦਰਸ਼ਨ ਹੋਊਗਾ ਕਿਸੇ ਤੇ ਚਾਹੇ ਬੁਨਿਆ ਮੰਨ ਲਿਆ ਉਹਦਾ ਮਨ ਬਣ ਗਿਆ ਮਨ ਨਾਲ ਮਨ ਬਣਦਾ ਉਹ ਨੋ ਤੇਹੀ ਬਣਦਾ ਜਿੰਨੀਆਂ ਸਾਡੀਆਂ ਮਨੋਤਾ ਨੇ ਉਹ ਜਿਹੜੀ ਸਾਡੀ ਥੈਲੀ ਆ ਨਾ ਜਿਹੇ ਮਨੋਤਾ ਨੇ ਥੈਲੀ ਭਾਈ ਜਣਾ ਉਹਦਾ ਨਾਮ ਆਣਾ ਉਹਦੇ ਚ ਉਹੀ ਨਿਕਲਦੀਆਂ ਨੇ ਮਨੋਤਾ ਹੀ ਸੱਡਾ ਤੇ ਉਹੀ ਨਿਕਲਣਾ ਵਿੱਚ ਪਾਇਆ ਉਹ ਭਾਟੇ ਦੀ ਵਸਤੂ ਪਾਈ ਉਹ ਹੀ ਨਿਕਲਿਆ ਅਸੀਮ ਹਜਿਆ ਜੋ ਜੋ ਵੀ ਸਿੱਖੀ ਚ ਆ ਗੁਰਦੁਆਰਾ ਸਾਡਾ ਇੱਥੇ ਆਇਆ ਇੱਥੇ ਘੁੰਮਣ ਤੋਂ ਵੀ ਨਿਕਲਦੀਆਂ ਬਾਹਰ ਹੋ ਕੇ ਨਿਕਲਦਾ ਦੁਜਿਆਂ ਨੇ ਆਸੀ ਬੁੱਧੜੀ ਮੱਕੇ ਇਹ ਕੁਝ ਨਹੀਂ ਹੈਗਾ ਫਜੂਰ ਸਾਹਿਬ ਹੈਗਾ ਅਧਿਮਨਾ ਹੁੰਦਾ ਕੋਣਾ ਦੀਓ ਕੋਣਾ ਦਾ ਉਹ ਮਾਨਾ ਉੱਥੇ ਮਾਨਾ ਸਾਡਾ ਇੱਥੇ ਹੋ ਨਾ ਉਥੇ ਕੁਝ ਨਾ ਉਥੇ ਹੈ 돌ਿਆ ਗਾ ਤੇ ਬੰਦੇ ਮਲਾਵ ਚੱਦੀ ਹੁੰਦੀ ਆ ਤਕਰੀਬ ਜਿ ਕਿ ਜਿਹੜੀ ਬਣਾਉਤ ਸੱਚੀ ਬਣਾਉਤ ਦੇ ਵਿੱਚ ਕੁਛ ਹੁੰਦਾ ਝੂਠੇ ਕੋਈ ਕੁਛ ਨਹੀਂ ਸੱਚੀ ਝੂਠੀ ਹੋਣ ਕੀ ਹੁੰਦੀ ਹੈ ਸਵਾਲ ਇਹ ਪੈਦਾ ਹੋ ਜਾਣਾ ਉਹ ਕਹਿੰਦੇ ਸਾਡੀ ਸੱਚੀ ਹੈ ਅਸੀਂ ਕਹਾਂਗੇ ਸਾਡੀ ਸੱਚੀ ਹੈ ਸੱਚੀ ਕੀ ਦੀ ਝੂਠੀ ਕੀ ਦੀ ਇਹ ਸਵਾਲ ਖੜਾ ਹੋਏਗਾ ਨਾ ਇਹੀ ਸਵਾਲ ਬਰਬੜੀ ਖੜੇ ਨੇ ਸਾਰੇ ਸੱਚਾ ਝੂਠ दी ਮਾਹੌਲ ਡਿਸਕਸ करके ਸਾਬਤ ਕੀਤੇ ਕਿ ਇਹ ਸੱਚੀ ਹੈ ਬਾਕੀ ਝੂਠੀ ਹੈ। ਵਿਰਤੀ ਸਾਖਤ ਕੀ ਆਰਜਾ। ਸਾਖਤ ਦੀ ਜਿਹੜੀ ਆਜਾ ਵਿਰਤੀ। ਵਿਰਤੀ ਨਹੀਂ ਹੈ ਤਾਂ ਕੋਈ ਕਹੇ। ਆਲੇ ਦੁਦਤੀ ਕੋਈ ਨਹੀਂ ਕਹੇ ਉਹ ਨਹੀਂ ਹੈ। ਇਹਦਾ ਮਤਲਬ ਮੰਨ ਲਈ ਸਾਰਿਆਂ ਨੇ। ਚਾਹੇ ਉਹ ਜਿੱਥੇ ਜਾਇਜ਼ ਨਹੀਂ ਹੋਣਾ पर भुगतता रही मान्यता रही ना भी चोरी करना जो मैं पर करते हैं लोग मान्यता ले अनाडे सुन더라 ना गलत है वले रहे हैं अब सर पढ़े भी जा रहे हैं समझते हैं कि ठीक नहीं है पर फिर भी करते हैं औरा भी मजबूरी है वो बंदे अपने कह दी इन्हें माने वाला मन जाने हुए ਇਵੇਂ ਜੀ ਤਰਬ ਗਏ ਜਿਹਦੇ ਦੇ ਲੋ ਕਸੂਰ ਜਾਣਦੇ ਹੋਏ ਵੀ ਉਹ ਨਾ ਲਪਨਾ ਕਰ ਜਾਂ। ਸਾਰੇ ਬੰਦੇ ਨੇ ਬੁੱਧੀ ਸਾਖ ਕੀਆ ਚ। ਫਿਰ ਵੀ ਅੱਗੇ ਬੁੱਧੀ ਜਾ ਰਹੀ ਹੈ। ਹਾਂਜੀ ਸੱਚ ਬਿਨਾ ਕਹਿ ਸੱਚ ਕਹਿ ਹੋਪ ਸੁੱਚਾ। ਸੱਚ ਬਿਨਾ ਕਹਿ ਹੋਪ ਸੁੱਚਾ ਸੱਚ ਤੇ ਬਿਨਾ ਸੁੱਚਾ ਕਿਵੇਂ ਹੋਵੇ? यह मतलब सच्चा होण आया थी सच्चा है भी सी सच्चा हो के की हो भाई सच्चा होण से आया थी जे सच्चा और टकी होता झूठा कि झूठ है झूठ नु झूठ कहया है है झूठ है और झूठ है एको ही दो है अर्थ दे दो ਜੂੜਾ ਝੂਠ ਦਾ ਕੋਈ ਅਰਥ ਨਹੀਂ ਕਿਉਂਕਿ ਮੂੰਹ ਫੇਰੇ ਮੂੰਹ ਝੂਠਾ ਜਿਵੇਂ ਕਹ ਮੂੰਹ ਝੂਠਾ ਹੈ ਲਿਖਿਆ ਉਹ ਫੇਰੇ ਜੇ ਉਹ ਫੇਲਵੇ ਸੱਚ ਤੋਂ ਮੂੰਹ ਝੂਠਾ ਹੈ ਮੂੰਹ ਤਾਂ ਵਿੱਚ ਝੂਠਾ ਹੀ ਨਿਕਲੂਗਾ ਜੂਠਾ ਹੈ ਤੇ ਤੂੰ ਸੱਚੀ ਨਹੀਂ ਬੋਲਦਾ ਝੂਠਾ ਨਹੀਂ ਇਹ ਕਹਾ ਝੂਠਾ ਕਹ ਹੈ ਜੂੜਾ ਜੂੜੂ ਕੋਈ ਕੋ ਸਭਿਆ ਹੈ ਕੁਰਬਾਨੀ ਦੇ ਵਿੱਚ ਕਿਸੇ ਵੇਲੇ ਹੋਰ ਦਾ ਝੂਠ ਕਹਦੇ ਹੁਣ ਅੰਬਰਸਾਲ ਦਾ ਖਾਸ ਤੌਰ ਤੇ ਲਫਜ਼ ਉਹ ਤਾਂ ਸਿੱਧੀ ਝੂਠ ਹੈ ਜਿਹੜੇ ਬੰਦੇ ਝੂਠ ਬੋਲਦੇ ਨਾ ਅੰਬਰਸਾਲ ਹੀ ਨਹੀਂ ਝੂਠ ਹੈ ਉਹ ਕਹਿੰਦੇ ਝੂਠ ਹੋਵੇ ਹੋ ਸਕਦਾ ਉਸ ਇਲਾਕੇ ਦੀ ਬੋਲੀ ਹੋਵੇ ਜਿਆਦਾ ਪੁਰਾਣੀ ਹਾਂਜੀ ਨਾ ਕਹੇ ਹੁਬਤ ਸੱਚਾ ਸੱਚਾ ਹੋਵੇ ਇਹ ਸੱਚਾ ਹੋਣ ਆਇਆ ਜਿੱਦਾਂ ਇਹ ਸੱਚਾ ਹੋ ਗਿਆ ਉਸ ਵੇਲੇ ਆਇਆ ਤੇ ਇਹ ਰੂਹੇ ਕੋਲ ਆਇਆ ਆਇਆ ਤੇ ਸੋਚਾ ਹੋਣਾ ਆਇਆ ਝੂਠਾ ਝੂਠ त्यागਣ ਆਇਆ ਆ ਝੂਠ ਇੱਥੇ ਆ ਜਿੱਥੇ ਸੱਚੇ ਖੰਡ ਦੀ ਜਿੱਦੀ ਝੂਠ ਹੈ ਜਿਵੇਂ ਰਥੋਰੀ ਦੀ ਜਿੱਦੀ ਝੂਠ ਹੈ ਉਹ ਰੋਸੋਚ ਨਹੀਂ ਜਾਂਦੀ ਮੁੜ ਕੇ ਜੋਈ ਤਾਂ ਅੱਗੇ ਜਾਂਦਾ ਨਾਲ ਖਾਣ ਵਾਲਾ ਪਰ ਜਿਹੜਾ ਝੂਠ ਵਾ ਜਾਂਦੀ ਹੈ ਉਹ ਰੋ ਜਾਨੀ ਵਾਪਸ ਜਾਂਨੇ ਆਪ ਉਹ ਹੋ ਜਿਹੜਾ ਸਰਦਾਰ ਜੀ ਰਾਸਤੇ ਵਿੱਚ ਚਲੋ ਦਸਵੇਂ ਨਾ ਗੱਲ ਹੋ ਅਲੱਗ ਰੱਖਦੇ ਹਾਂ ਜੈਸੇ ਸੁਪੂ ਬਾਦੀਏ ਹੋਰ ਬਾਦੀਏ ਕਿਤੇ ਬਾਦੀਏ ਅਲੱਗ ਹੋ ਰੱਖਦੇ ਹਾਂ ਇਹ ਤੋਂ ਛੋਟੇ ਛਿੱਟਿਆ ਨਾ ਵਾਹ ਬਾਹਰ ਸ਼ਬਦਾਂ ਦੀ ਜਿੱਦ ਨਾਲ ਚੱਲਦਾ ਉਹ ਬਾਹਰ ਉੱਤੇ ਲੰਗਰ ਚੱਲਣਾ ਜੋ ਵੀ ਘਟੇ ਜਦੋਂ ਉੱਥੋਂ ਹੀ ਚੱਲਦਾ ਇੱਥੇ ਤਾਂ ਸੁਣਦਾ ਹੀ ਆ ਉਹ ਉਹ ਤਾਂ ਕਿਹਿਆ ਸਤ ਸੰਗਤ ਸੱਚਖੰਡ ਚ ਇੱਥੇ ਸਤ ਸੰਗਤ ਨਹੀਂ ਹੁੰਦੀ ਉੱਥੇ ਦੀ ਸ਼ਾਇਦ ਕਿਰਤ ਦਾ ਲੈਸੀ ਪਹਿਲਾਂ ਜਿਹੜੇ ਸਤ ਸੰਗਤ ਹੈ ਇੱਥੇ ਹੋਈ ਨਹੀਂ ਜੋ ਇੱਥੇ ਦਾ ਝੂਠਾ ਝੂਠ ਹੈ ਜੇ ਸਤ ਸੰਗਤ ਉੱਥੇ ਮੈਂ ਜਾਵਾਂ ਥੱਕਦਾ ਸਰੀਰ ਨਾਲ ਹੈ ਪਹਿਲਾਂ ਸਤਨਾਗਨ ਸਰੀਰ ਛੱਡ ਕੇ ਹੁੰਦਾ ਤਾਂ ਮਾਇਆ ਝੂਠੀ ਮਾਇਆ ਨੂੰ ਛੱਡ ਕੇ ਸਤਨਾ ਨੂੰ ਸੰਭਤ ਅਗਮਨ ਉਹ ਗਿਆ ਧੰਨ ਧੰਨ ਸਤ ਸੰਗਤ ਜਿਹੜੀ ਜਿੱਤ ਹਰ ਰਸ ਪਾਇਆ ਜਿੱਤੇ ਹਰ ਰਸ ਤੇ ਜ਼ਬਾ ਕੋਈ ਨਹੀਂ ਰੂਹ ਆ ਰਹਾ ਤਾਂ ਸੱਚਖੰਦ ਦੇ ਅੰਦਰ ਵਰ੍ਹਦੀ ਹੈ ਬੜਾ ਵਰਸਦਾ ਕਿੱਥੋਂ ਵਰਸਦਾ ਹੰਪੜ ਦੇ ਨਾ ਬਰਸਦਾ ਬਰਸਾ ਕਿੱਥੋਂ ਐਸੇ ਦਾ ਝੂੜ ਵਰਸਦਾ ਸਾਰੇ ਝੂਠੀਆਂ ਮਤਾਂ ਬਾਤਰੂ ਬੜਾ ਇਗਿਆਨਦਾਰ ਬਾਤਰੂ ਨਦੀ ਕਿਉਂ ਕਿ ਬਾਜ਼ ਤੋਂ ਨਦੀਆਂ ਨਾਲੇ ਪੈਦਾ ਹੁੰਦੇ ਨੇ ਜਿਵੇਂ ਜੋ ਪ੍ਰਚਾਰ ਵਾਰਜੋ ਰਹੀਆਂ ਨਦੀਆਂ ਨਾਲੇ ਪੈਦਾ ਹੁੰਦੇ ਨੇ ਬੱਤਾਂ ਨਾ ਕੋਲੇ ਗੱਬਰਾ ਕੇ ਜਗਨਾ ਦੇ ਸਭ ਸੁੱਤੀਏ ਰੱਖਿਆ ਤਾਂ ਰੱਖਿਆ ਹੋਇਆ ਕੁਝ ਬੈਕਗ੍ਰਾਉਂਡ ਲੇਤਾ ਪਾਇਦੀ ਆਪਰ ਤਾਂ ਸਾਡੀ ਬਰਸਾ ਲਿਖਿਆ ਜੇ ਬਾਜ਼ ਹੋਊ ਤਾਂ ਨਦੀਆਂ ਨਾਲੇ ਵੀ ਪੈਦਾ ਹੋਣਗੇ ਜਿੰਨਾ ਦਾ ਨਦੀਨ ਦਾ ਜਿੱਥੇ ਜਿੱਥੇ ਕੋਈ ਰਿਸ਼ੀ ਗੁੱਡੀ ਰਹਿੰਦਾ ਸੀ ਉਹਦੀ ਵਿਚਾਰਧਾਰਾ ਉਹ ਜਿਹੜੀ ਰਹੀ ਸੀ ਉਹਦੇ ਵਿੱਚ ਦੌਰ ਥੇ ਨੁਕ। ਉਹ ਕਿਸ਼ਨ ਤਾਂ ਆਜੋੜਿਆ ਹੋਇਆ ਹੈ ਜਬਨ ਇਹਦਾ ਨਾਮ ਜਿਹੜੀ ਕਾਲਿੰਦਰੀ ਰੱਖਿਆ ਹੋਇਆ ਕਲਿੰਦਰੀ ਕਲਿੰਦਰੀ ਇਹਨੂੰ ਅਰਜਨ ਕਾਲਿੰਦਰੀ ਆਇਆ ਹੈ। ਉਹ ਪਿਛਲੇ ਗ੍ਰੰਥਾ ਜੀ ਕਾਲਿੰਦਰੀ ਕਹਿੰਦੇ ਨੇ ਜਬਨ ਨੂੰ ਜਬਲੂ ਵੀ ਜਬਲੂ ਜਾਂਬੂ ਦਾ ਮਾਰਗ ਕੁਟੀ ਗੰਗਾ ਜਬਲੂ ਲਾਈ ਜਗਵੀਰ ਨੇ ਉੱਥੇ ਗਿਆ ਇਹ ਨਾਮ ਰੱਖਿਆ ਨੇ ਇਹਦੇ ਨਾਲ ਜੋੜੀ ਗਈ ਹੈ ਇਸ ਨਾਲ ਜਬਲੂ ਨੱਪਾ ਮਾਰ ਕੇ ਕੋਈ ਜੰਦਲਾ ਮਾਰਿਆ ਉਹ ਜਬਲ ਜਬਲ ਮਾਰਗ ਦਾ ਪਾਣੀ ਹੋਇਆ ਜਬਲਪੁਰ ਜੰਪੜ ਮਾਰਜਾ ਦਾ ਖੜਵਾਲੀ ਨਦੀ ਹੈ ਜਿਹੜੀ ਉਹਦਾ ਨਾਂ ਜਾਂ ਬੱਤੀ ਗੁਫਾਇਨੀ ਨਦੀਆ ਜੇਦਾ ਜਮਨਾ ਜਲਦਾ ਪਾਣੀ ਜਿੰਨਾ ਪਾਣੀ ਜਮਨਾ ਦਾ ਪਾਣੀ ਜਾ ਕੇ ਰਲ ਗਿਆ ਨੰਗਾਚ ਉਹ ਲਹਾਵਾ ਉਹਦਾ ਚਲਿਆ ਜਾਊਗਾ ਗਾਂ ਸਬੂਦਰ ਤੱਕ ਵਜੜਾ ਰਾਦੇ ਵਿੱਚ ਜਦੋਂ ਪੂਰਾ ਨੀ ਪੂਰਿਆ ਲੋਕਾਂ ਨੇ ਰਹਿ ਗਿਆ ਥੱਲੇ ਉਹ ਤਾਂ ਇਹ ਰਹਿ ਲਈ ਉਭਜਾਇਆ ਜਿਆ ਰੜ ਜਿਆ ਦੋ ਤਾਰਾਂ ਦੇ ਜੋ ਗੱਡੀਆਂ ਲਿਜ ਜਬ ਰਜ ਉਹ ਛਿੜਾ ਜੋ ਸੰਤਤਾਂ ਤਾਂ ਨਿਕਲ ਕੇ ਅੱਗੇ ਗੁਰਮਤਿ ਚੱਪ ਉਹਦਾ ਪੱਧੂ ਦੇ ਪਾਸੇ ਲੈਣੇ ਆਣਾ ਜਿਹੜੀ ਤਿਆਂ ਜੋ ਚੱਗੇ ਆਦਮੀ ਬਿਆਨ ਦਾਲੇ ਬੁਰਦਾਰ ਆਦਮੀ ਸਾਗੇ ਸਰਬੋ ਸੁਤੇ ਜੀ ਰਾ ਕੋਈ ਵੀ ਹੋਵੇ ਜਿਹੜੇ ਦਾ ਗਾਣਾ ਵਾਲਾ ਰਾਹ ਬਦਲ ਕੇ ਜਿਵੇਂ ਕਬੀਰ ਆਇਆ ਪੈਣਾ ਥੱਲੇ ਹੀ ਆਇਆ ਦੁਆਟ ਹੋਇਆ ਹੈ ਉਹ ਨਾ ਨਹੀਂ ਪੂਰੇ ਦੁਆਟ ਹੋਇਆ ਹੈ ਕਹਾਂ ਗਾਹ ਸੀਗਾ ਉੱਥੇ ਉਹਨਾਂ ਕੋਲ ਕਹਾਂ ਰਸਤਾ ਨਹੀਂ ਕਹਾਂ ਇਹ ਰਸਤਾ ਹੈ ਬੇਦਰਸਤ ਹੈ ਇਹ ਰਸਤਾ ਹੀ ਰਸਤਾ ਨਹੀਂ ਆ ਕੇ ਰਸਤਾ ਕੋਈ ਉਹ ਜਪਨਾ ਨੂੰ ਕੋਈ ਜਾ ਕੇ ਗੁੰਦੇ ਚਲਾਣਾ ਪਿਆ ਜਿੱਦੀਆਂ ਧੜੀਆਂ ਨੇ ਅਪਾੜ ਚ ਆਉਂਦੀਆਂ ਸਾਰੀਆਂ ਉਹਦੇ ਛੁੱਟ ਜੰਦੀਆਂ ਸਭ ਜਾ ਕੇ ਸਾਹਿਬ ਦਾ ਕਿ ਬਖਸ਼ਾ ਦੱਸਿਆ ਹੋਇਆ ਸਾਡੇ ਕੋਲ ਇਹਨੂੰ ਗੰਦਾ ਮੰਨਿਆ ਵੀ ਸਾਰੀਆਂ ਇਹਨਾਂ ਨੂੰ ਲੈ ਕੇ ਸਬੂਤਰ ਜਾ ਬੜਦੀ। ਕੁਲਤੇ ਸਲਾਕੇ ਚੋ ਅਜ ਬੜਦੀ। ਇਹ ਇਸ ਤਰੀਕੇ ਜਾਂਦੀ ਹੈ ਕੇ ਜਾ ਸਤਾਰਾ ਜੁੜੀਆਂ ਜਾਂਦੀਆਂ ਨੇ ਉਹ ਬ੍ਰਹਮਪੁੱਤਰ ਵੀ ਹੁੰਦੀ ਹੈ ਬ੍ਰਹਮਪੁੱਤਰ ਵੀ ਹੈ ਵਿਚਾਲੇ ਜਾਂਦਾ ਜਾ ਕੇ ਉਹ ਸਭ ਤੋਂ ਵੱਡੀ ਨਦੀ ਹੈ ਸਾਰਾ ਮਧਿਆ ਦਾ ਇਛਾ ਕਰਦਾ ਹੈ ਉਹ ਨਦੀ ਹੈ ਸੋਆ ਅਗਿਰਤਾ ਨਾਮ ਬਿਨਾ ਤਨ ਅੰਧ ਉਹ ਤਾਂ ਵਰਤਾ ਨਾਮ ਬਿਨਾ ਤਨ ਉਸ ਮੁਖ ਆਉਂਦਾ ਨਾਮ ਤੋਂ ਬਿਨਾ ਜੇ ਨਾਮ ਨਹੀਂ ਹੈ ਜੇ ਤਤ ਗਿਆਨ ਨਹੀਂ ਹੈ ਜੇ ਆਤਮ ਗਿਆਨ ਨਹੀਂ ਹੈ ਆ ਜਿਹੜਾ ਸਰੀਰ ਹੈ ਸਾਰਾ ਇਹ ਜਦੂਦ ਤੇ ਇਹਦਾ ਕੋਈ ਫਾਇਦਾ ਨਹੀਂ ਬੱਸ ਟੋਪਾ ਜਾਂ ਸਰੀਰ ਹੁੰਦਾ ਉਹ ਵਿਚਾਰੇ ਦਾ ਇੱਕ ਬੋਝ ਹੁੰਦਾ ਤੇਰਾ ਦੀਨਾ ਹੁਣ ਹੁੰਦੀ ਸੰਖਾਰੋਂ ਨਹੀਂ ਦੇਖਾਂ ਜੀਵਨ ਤਾਂ ਜਿਉਂਦਾ ਹੋਣਾ ਜ਼ਰੂਰ ਠੋਕ ਲੈਣੀ ਹੁੰਦਾ ਡਿਪੈਂਡੈਂਟ ਰਹਿਣਾ ਨਹੀਂ ਕਿਸਨਾ ਕਿਸਦਾ ਉਈ ਦਬੂ ਤਾਂ ਖਾਉ। ਉਹ ਤੋਂ ਉੱਥੇ ਸੜਕ ਪਾਰ ਕਰਨ ਲੱਗਿਆ ਵੀ ਸੋਚੂ। ਸੋਣ ਲੱਗਿਆ ਵੀ ਓਖਾ। ਇਹ ਜਿਹੜਾ ਹੈ ਸਰੀਰ ਚਾਹ ਤੇ ਬਿਨਾ ਨਾਮ ਤੇ ਬਿਨਾ। ਕੋਈ ਠੋਕਰ ਹਿੰਦੇ ਨੂੰ। ਜੀਵਨ ਜੀਵਨ ਲੋਕ ਜਿੰਦਾ ਚਿੰਤਾ ਵੀ ਜਾਂਦੇ ਨੇ। ਉਹ ਪਸ਼ੂ ਜਿਹੜਾ ਜਾਂਦਾ ਨਹੀਂ ਉਹ ਆਦਿ। ਵਰਤਾਉ ਤਾਂ ਕਿਹਾ ਪਸ਼ੂ ਦੇ ਜੀਵ ਜੀਵ ਨੂੰ ਕਿਹਨ ਵਰਤਾਉ ਜਿਕੇ ਤਾਂ ਉੱਥੇ ਵੀ ਬਰੇ ਉੱਥੇ ਵਰਤਾਉ ਕਿਉਂ ਨਹੀਂ ਕਿਹਾ ਇੱਥੇ ਵਰਤਾਉ ਕਿਉਂ ਜੀ ਮਨ ਉਹ ਵੀ ਗਿਆ ਰਿਹਾ ਹੈ ਜੀ ਮਨ ਉੱਥੇ ਵੀ ਤਾਂ ਵਰਤਾਉ ਹੀ ਨਹੀਂ ਇਹ ਤੇਲੀ ਅਵਸਰ ਗੱਲ ਤੇ ਠੀਕ ਆ ਪਰ ਦਸਰ ਸਵਾਲ ਤੁਸੀਂ ਪੁੱਛ ਲਿਆ ਪਰ ਇਹ ਤੇਰੀ ਹੌਸਲ ਹੈ ਤੇਰੀ ਬਾਤ ਇਹ ਤੇਰੀ ਬਧੀਆ ਗੋਵਿੰਦ ਮੰਨ ਲਈ ਇਹ ਤੇਰੀ ਬਧੀਆ ਗੋਵਿੰਦ ਮੰਨ ਲਈ ਆ ਉਹਨਾਂ ਦੀ ਬਧੀਆ ਗੋਵਿੰਦ ਮੰਨ ਲਈ ਹੈ ਪੁਰਾਣਾ ਜੋ ਲੈ ਉਹ ਜੋ ਉਹਨਾਂ ਦਾ ਟਾਰਗੇਟ ਹੈ ਉਸ ਜੁੱਦ ਉਹਨਾਂ ਦਾ ਟਾਰਗੇਟ ਪੂਰਾ ਹੋ ਜਾਣ ਉਹ ਕੋਵੇ ਨਾ ਹੋਵੇ ਉਹ ਜਮਲਬੜਾ ਡਰ ਘਟੂ ਦਾ ਪਾਣੀ ਜਿੱਦ ਇਹ ਗੋਵਿੰਦ ਮੰਗਰ ਕੀ ਵਰੀਆ ਹੋਰ ਜਨਮ ਕੋਈ ਗੋਵਿੰਦ ਮੰਗਰ ਕੀ ਵਰੀਆ ਜੀ ਜੇ تیر ਜਾ ਕੇ ਵਿਚਨਾ ਨਿਸ਼ਾਨੇ ਤੇ ਵਜਿਆ ਜਿੱਦਾ ਸਾਰਾ ਜਿੰਨੇ ਹੁਣ ਤੇ ਥੱਲੇ ਤੇ ਚੜ ਕੇ ਫੋਕਾ ਚਲੇ ਗਿਆ ਜੇ ਜੇ ਬਜਾਣਾ ਨਾਲ ਸਾਥੰਦੇ ਜਿਹੜਾ ਉਹਦਾ ਪੂਰੇ ਮੁਖੀ ਆ ਤੇ ਖਿਚੂ ਚ ਉਹ ਵਜਣੀਆਂ ਜੇ ਉਹ ਨਾ ਵਜੀ ਸਾਰਾ ਪਿਛਲਾ ਵਿੱਚ ਇਹਨਾਂ ਨੂੰ ਜਾਣੋ ਇਹਨਾਂ ਪਿਛਲੇ ਨਾ ਪਿਛਲੇ ਤਾਂ ਲੱਗੇ ਉਹਦੇ ਉਹ تیر ਪਿਛਲੇ ਦੇ ਸੱਤੇ ਮੁਖੀ ਹੁੰਦੀ ਆ ਜਦੋਂ ਪਿਛਲੇ ਦੇ ਸੱਤੇ ਹੀ ਆ ਸਾਡਾ ਉਹ ਜੱਤੀ ਨਾਲੇ ਜਾਂਦਾ ਹੈ تیر ਕਾਂ ਨੂੰ تیر ਕਿਹਾ ਉਹ ਕਹਿੰਦਾ ਅਹੇ ਇਹਨੂੰ تیر ਨਹੀਂ ਕਿਹਾ ਜਾ ਸਕਦਾ ਆਹੋ تیر ਉਹ ਬੇ تیر ਜਿਵੇਂ ਬੇਖਾ تیر ਬੇਫੂਤੀ ਦਾ تلوار ਹੈ ਜਬ ਬੇ ਕਹਤਾ ਹੈ ਬੱਚਾ ਦੇਜਾ ਨਾਮ ਨਿਸ਼ਾਨ ਉਹਨੇ ਕਹੋ ਜਬ ਬਬੇ ਘੁੱਤੀਆ ਸਤੋਬਰ ਸੋਤੋ ਹਮਾਰੀ ਘੋੜਾ ਗਿਆ ਅੰਚਰਾਇਆ ਥੱਲੇ ਦਾ ਤੀਰ ਪਿੱਛੋਂ ਬਣ ਕੇ ਆਇਆ ਲੱਕੜ ਉਹ ਚੱਲ ਕੇ ਆਇਆ ਤੀਰ ਪਿੱਛੇ ਹੀ ਹਲਪਣ ਵਾਲੇ ਆਖਰ ਕਿੱਸਾ ਤਾਂ ਰਿਹਾ ਹੈ ਤੀਰ ਦਾ ਜਿੱਤੋ ਤੀਰ ਧਮਿਆਂ ਚਲਿਆ ਉਹ ਹਿੱਸਾ ਤਾਂ ਹੋਇਆ ਦੂਰੋਂ ਚੱਲ ਕੇ ਵੀਰ ਕਨਾ ਦੂਰੋਂ ਚੱਲ ਕੇ ਚੱਲਿਆ ਉਹ ਪਿੱਛੇ ਤੋਂ ਆਇਆ ਉਹ ਜਿਹੜਾ ਚਿੱਲਾ ਸੀ ਨਾ ਕਦ ਉਹਦੇ ਦਾ ਪਿਛਲਾ ਇੱਦਾਂ ਹੀੜਾ ਉੱਥੋਂ ਉਦੋਂ ਨਾਲ ਚੱਲਿਆ ਨਿਛਾਨੇ ਤੇ ਜਾਂਦਾ ਜਾਂਦਾ ਕਿਤੇ ਵੀ ਜਹ ਲਿਆ ਰਾਜੋ ਹਵਾ ਦਾ ਇੱਯਾ ਖਸ ਹੋ ਗਿਆ ਹਵਾ ਵੀ ਤਾਂ ਦਿਨਾਂ ਬਦਲ ਦਿੰਦੀ ਹੈ ਇਹ ਹਵਾ ਚੱਲ ਜਾ ਤੇਜ ਸਨ ਹੋ ਗਈ ਬਹੁਤ ਧੀਆ ਲੋਭ ਉਹ ਲੈ ਹੱਥ ਜਾਨਾ ਬਦਲ ਦਿੱਤੀ ਹੈ ਲੋਭ ਲਹਿਰ ਬਦਲਦੀ ਹੈ ਜਾਨਾ ਇਨਸ਼ਾਅੱਲਾ ਚੱਲਿਆ ਆਇਆ ਜਾਨ ਠੀਕ ਸੀ ਚੱਲਿਆ ਆਇਆ ਬਿਲਕੁਲ ਠੀਕ ਸੀ ਬਾਹਰ ਬੁੱਤੇ ਚ ਆਇਆ ਲਹਾਲੇ ਰ ਸੀ ਚੱਲਿਆ ਬਿਸ਼ਾਦੇ ਰ ਸੀ ਲੋਭ ਲਹਿਰ ਦੇ ਬਦਸਤੌਰ ਔਰ ਸਾਖਤੋਂ ਦਾ ਪ੍ਰਚਾਰ ਕਰ ਰਹੇ ਉਹ ਲੋਬ ਲਹਾਜ਼ੇ ਪ੍ਰਕਾਰ ਤੋਂ ਕਿ ਨਿਸ਼ਾਨੇ ਤੇ ਜਾਵੇ ਤੁਸੀਂ ਨਿਸ਼ਾਨੇ ਤੇ ਜਾ ਹੁਣੋਂ ਦਾ ਸਾਰਾ ਜੱਦੂ ਜਾਂਦੇ ਕੋਈ ਨਿਸ਼ਾਨੇ ਤੇ ਚਲਾਣਾ ਜਾਵੇ ਜੇ ਕੋਈ ਨਿਸ਼ਾਨੇ ਤੇ ਚਲਾਗਾ ਘਰ ਮੁਕਤਾ ਪੈਜੀ ਸਾਡੇ ਜੱਦ ਤੇ ਜਾਓ ਕੀ ਆਰ ਜਾ ਹੁਣ ਆਇਆ ਜੀ ਸੱਚ ਬਿਨਾ ਕਹਿ ਹੋਵੇ ਸੱਚ ਸੱਚ ਦੇ ਬਿਨਾਂ ਸੋਚਾ ਨਹੀਂ ਹੋ ਸਕਦਾ ਸੱਚ ਦੇ ਸੱਚ ਦੇ ਨੇੜੇ ਜਾਂਦਾ ਜੀ ਸੱਚ ਤੋਂ ਰਲਦਾ ਕੁਛ ਅਭਿਧੀ ਲੱਗਦੀ ਸੱਚ ਦੇ ਬਿਨਾਂ ਸੋਚਾ ਨਹੀਂ ਹੋ ਸਕਦਾ ਸੱਚ ਤੋਂ ਸੱਚ ਨੂੰ ਨਫਰਤ ਤੇ ਆਰਜ ਬੁਲਤੀ ਚੱਲੀ ਗਈ ਫਿਰ ਜਨਮ ਗਿਆ ਬਸ ਚੱਗ ਨਹੀਂ ਆਹ ਗੱਲ ਕਹਿੰਦੇ ਜੀ ਨਾ ਬਿਨਾਂ ਤਾਂ ਐਸਾ ਉਹੀ ਗੱਲ ਕਹਿ ਜਾਂਦੇ ਪਰ ਪੱਲੇ ਕੀ ਪੈਂਦਾ ਕਹਤੇ ਇਹ ਗੱਲ ਵੀ ਸਾਡੇ ਜਾਂਦਾ ਸਾਖਤ ਕੌਣ ਹੈ ਕਿਉਂ ਜਾਣਦਾ ਕਿ ਵੀ ਜਾਣਦਾ ਹੈ ਜਿਨਾ ਜਿਹੜੇ ਪੂਰਾ ਅਸੀਂ ਦੇਖ ਨਹੀਂ ਲੈਂਦੇ ਸੰਸਾਰ ਜੋ ਕੁਝ ਹੋਇਆ ਹੋਇਆ ਸਾਡੇ ਆਲੇ-ਦਲੇ ਦੇਖ ਕੇ ਕਹੀ ਹੈ ਜੋ ਕਹਿ ਗਿਆ ਸੁਣੇ ਸਭ ਸੋ ਬੋਲੇ ਜੋ ਪਿੱਛੇ ਜੋ ਉਹਨਾਂ ਨੇ ਅੱਖਾਂ ਨਾਲ ਦੇਖਿਆ ਸੋ ਦੱਸਿਆ ਜਿਨਾ ਚਿਰ ਅਸੀਂ ਦੇਖ ਨਹੀਂ ਲੈਂਦਾ ਕੋਈ ਫਾਇਦਾ ਨਹੀਂ ਹੱਸਦਾ ਫਾਇਦਾ ਕੀ ਹੈ ਫਰਕ ਹੀ ਨਹੀਂ ਜੋ ਹੋ ਰਿਹਾ ਉਹ ਦੇਖੋ ਵੀਰ ਕਿ ਤੁਹ ਚੱਲਦਾ ਆਹਰ ਪਿੱਛੇ ਪੁਰਵ ਸਿਰਫ ਝੂਲ ਸਮਝਿਆ ਔਰ ਪਿੱਛੇ ਡੱਡੀ ਹੈ ਅਸੀਂ ਕਹਿੰਦੇ ਮਾਰ ਤਾਂ ਉਹੀ ਨਹੀਂ ਗੱਲ ਨਾ ਮੁੰਦੇ ਠੀਕ ਆ ਮਾਰ ਮਟੁਖਾ ਜੋ ਨਹੀਂ ਕਰਦੇ ਪਰ ਉਹਦਾ ਉਹ ਚੱਲਦਾ ਨਹੀਂ ਸੇਹ ਦਾ ਤਾਕਤ ਉਸਨੇ ਦੇ ਦੀ ਦੇਖੋ ਪਿੱਛੇ ਸੇਹ ਉਹਦੇ ਰਿਹਾ ਪੂਰੇ ਦੇ ਦਖਣ ਵੱਲ ਨਹੀਂ ਜਾਂਦੀ ਇਹ ਪਿੱਛੇ ਜਾਂਦੀ ਸਾਰਾ ਪਿਛਲਾ ਵੀ ਨਾਲੇ ਲੈ ਜਾਂਦਾ ਜਾਦੇ ਆਪਣੇ ਪਾਣੀ ਚੱਲਿਆ ਤੇ ਪਿਛੇ ਪਾਣੀ ਚੱਲੇ ਹੋਏ ਸਾਰੇ ਬੇਕਾਰ ਬੱਤੀ ਸਾਰੀ ਜੀ ਜੀ ਆਹ ਗੱਲ ਨਹੀਂ ਬਿਲਕੁਲ ਕਹਿੰਦਾ 300 ਤੀਰ ਵਰਗ ਉਹ ਜੋ ਚੱਲਦਾ ਹੈ ਸੁਦਾ ਸੁਦਾ ਚੱਲਦਾ ਹੈ ਤੇ ਉਤੋਂ ਜਿਹੜੀ ਨੋਕ ਹੈ ਨਾ ਉਹਨੇ ਇੰਟਰੈਕਸ਼ਨ ਬਰਪੀ ਸਾਰੇ ਦੇ ਵਰਦੀ ਪਿੱਛੇ ਤੇ ਲੈ ਕੇ ਬਾਹਨੇ ਚੱਲਿਆ ਸਾਰਾ ਬੇਕਾਰ ਚੱਲਦਾ ਇੱਕ ਜੋਰ ਦੇ ਬੇਕਾਰ ਕਰਦਾ ਹਾਂ ਵਰਥਾ ਨਾਮ ਬਿਨਾ ਤਨ ਅੰਧ ਵਰਥਾ ਨਾਮ ਬਿਨਾ ਤਨ ਖੁੱਦ ਇਹ ਜਿਹੜਾ ਅੰਦਰ ਇਹਦਾ ਤੁਹਾਡਾ ਤੰਦਰ ਇਹ ਚ ਅੱਖ ਦੀ ਹੈ ਉਹ ਅੱਖ ਤੀਜੀ ਅੱਖ ਹੈ ਜੀ ਉੱਥੇ ਉਹ ਇੱਕ ਬੁੱਧੀ ਤੀਜੀ ਅੱਖ ਉਹ ਹੈ ਨਹੀਂ ਅੱਧੇ ਅੱਖ ਦੀ ਨੂੰ ਬਕਾਦੇ ਹਾਂ ਉਹ ਹੈ ਨਹੀਂ ਸਫੇਰੇ ਤਨ ਵੀ ਰੁੱਥਾ ਗਿਆ ਤੇਰਾ ਜੇ ਤੈਨੂੰ ਅੱਧਰ ਤਨ ਮਿਲਿਆ ਵਾਲ ਤਾਂ ਚਲੋ ਹੈ ਉਹ ਹੈ ਇਹ ਬਸ ਬੇਕਾਰ ਹੀ ਗਿਆ ਤੇਰਾ ਆ ਐਂਕੀ ਦਾ ਜਾਨੂ ਵੀ ਬੇਕਾਰ ਗਿਆ ਆਪਦਾ ਜਨੂ ਬੇਸਾ ਹੋ। ਹੋਜੀ। ਬਿਰਤਾਂ ਨਾਮ ਤਨ ਅੰਧ ਮੁਖ ਆਵਦੋ ਤਾਂ ਕੇ ਦੁਰਗੰਧ। ਮੁਖ ਜੋ ਖੀਤ ਕਰਦਾ ਬਾਹਰ। ਐਦੇ ਵਿੱਚੋ ਨਹੀਂ ਜਦ ਬੋਲਦਾ ਅਦੋਈ ਦਲੇ ਮੁਖ ਜੋ ਆਵਦੋ ਤਾਂ ਕੇ ਦੁਰਗੰਧ। ਸਰਕਾਰ ਦਸਵੰਦਰੀ। ਦੁਰਗੰਧ ਕੀ ਹੈ? ਜਿੱਤੇ ਤਵਰਤੀ ਗੱਲ ਹੈ ਦੁਰਗੰਧ ਹੈ ਜਿੱਤੇ ਪ੍ਰੇਮ ਦੀ ਗੱਲ ਸੁਣਦਾ। ਪ੍ਰੇਮ ਵਿੱਚ ਸੋਲਦੀ ਹੈ। ਜ਼ਫਰ ਦੇ ਬੇਦਖੀ ਨਫਰਤ ਪਾਉ ਚੋੜ ਹੋ ਲੂ ਨਫਰਤ ਹੋ ਲਾਜ ਰੋਬ ਹੋ ਲੂ ਸਾਥ ਹੋ ਸਾਥਾ ਵੀ ਆਪਣੇ ਆਪਣੇ ਪੱਤਾ ਬੋਲ ਨਹੀਂ ਗੀਆਂ ਗੁਰਬੰਦ ਹੋ ਕਹਿੰਦਾ ਲਸਣ ਕੀ ਖਾਂਣ ਕਹਿੰਦਾ ਉਹ ਵੀਰ ਆਹ ਆਹ ਬੇਰੀ ਦੇ ਵਿੱਚ ਵੀ ਦਰਦਾਂ ਦੇ ਹੁੰਦੀ ਹੈ ਸਾਕੇ ਤਾਂ ਜਾਂਦਾ ਲਸਣ ਕੀ ਖਾਂਣ ਕਹਿੰਦਾ ਬਹੁਤ ਤਖੜੀ ਦੂਰੋਸ ਮੈਂ ਲਉਦੀ ਥੋੜਾ ਜਿਹਾ ਗੱਡੀ ਰੱਖੀ ਹੈ ਉਹਦਾ ਆਦਾ ਵੀ ਸੁਣ ਕਹਿ ਜੀ ਦਗਲਾ ਹੋ ਜਾਂਦਾ ਸੀ ਇਕੀ ਲੋ ਬਿਲਡਿੰਗ ਲਾ ਸੰਦੇ ਇਧਰ ਵੀ भी ਵੀ ਸਲਿਆ ਬਾਸ ਜਿੱਦੀ ਜਾਂਦੇ ਸੀ ਉਹ ਪਤਾ ਨਹੀਂ ਕਿ ਮੈਨੂੰ ਜਿੱਦਾਂ ਮਰਜੀ ਕਪੜਾ ਰੱਖ ਲੀਆ ਇੰਨੀ ਸਮੈਲ ਸੀ ਸਾਇਕਲ ਆ ਬਹੁ ਬਤੀ ਯੋਜਨ ਦਾ ਸੀ ਬਾਹਰ ਜਾ ਕੇ ਜਿੱਥੇ ਪਾ ਲੱਗਦਾ ਹੋ ਉਸ ਕੋਲ ਤੋਂ ਬਹੁਤ ਤੇਜ਼ ਮਾਂਸਾਂ ਨਹੀਂ ਕਿ ਵੀਰ ਜਦ ਮੁੜ ਜੀ ਕੇ ਬੱਕ ਆਪਾਂ ਕਹਿੰਦੇ ਗੰਦ ਬਖਦਾ ਜਦ ਦਬਖਦਾ ਉਹ ਕੈਸਾ ਨਿਆਣਾ ਨੇ ਖਾਸ ਤਰੀਕਾ ਸਰਗਾ ਚੜਾ ਬਿਨ ਸਿਮਰੂ ਉਡੋਲਾ ਆਵਾ ਤਬ ਬੋਰਨਾ ਕੱਟ ਬਖੜ ਨਹੀਂ ਹਾਂ ਜੀ ਬਿਨ ਸਿਮਰਨ ਦਿਨ ਦਿਆਂ ਬੇਤਾ ਬਿਹਾਏ ਮੇਕ ਬਿਨਾ ਜੋ ਫੇਤੀ ਜਾਈ ਸਮਾਂ ਤੋਂ ਬਿਨਾ ਸਮੜ ਕੇ ਟਾਰਗੇਟ ਭੁੱਲਿਆ ਹੋਇਆ ਤਾਂ ਸਮਲ ਨਹੀਂ ਆ ਮੈਂ ਚੱਲ ਕੇ ਕਿੱਥੋਂ ਆਇਆ ਸਾਡੀਆਂ ਜੁੜਾਂ ਅਜ ਮੈਂ ਕਿੱਥੇ ਪਹੁੰਚ ਰਿਹਾ ਹਾਂ ਆ ਜਲ ਬੁਠਾ ਦੇ ਵਾਸਤੇ ਜੇ ਇਹਦਾ ਸਮਾਂ ਇਹਦਾ ਚੇਤਾ ਨਹੀਂ ਹੈ ਕਾਏ ਜਿਹੜਾ ਜੀਵਨ ਜਾ ਰਿਹਾ ਨਾ ਮੈਂ ਦੱਸਦਾ ਜਾ ਕਾਫੇ ਡਾਇਰੈਕਟਰ ਨੂੰ ਬਦਲੀ ਹੋਈ ਹੈ ਕਾਹਦੇ ਨਹੀਂ ਬਤਾ ਸੁਟਾ ਵਹਿ ਜਾ ਰਹੇ ਆ ਸੁਟਾ ਦਾ ਡਰਾਈਵਰ ਗੱਡੀ ਕਿਤੇ ਆਪੇ ਹੋ ਜਾਂਦੀ ਹੈ ਬੱਸ ਇਹਨੂੰ ਕਰਨੀ ਨਹੀਂ ਪੈਂਦੀ ਆਪੇ ਹੋ ਜਾਂਦੀ ਹੈ ਜੋ ਤਾਂ ਵੈਲਾ ਕਰਦਾ ਨੀ ਉਹ ਜਾਂ ਉਹਦੀ ਗੱਡੀ ਦਾ ਆਪੇ ਹੋ ਜਾਂਦੀ ਆ। ਆਸੇ ਆਸੇ ਇਹ ਹਵਾ ਨਾਲ ਆਪੇ ਹੋ ਜਾਂਦੀ ਆ। ਹਾਂਜੀ। ਬਿਨ ਸਿਮਰਨ ਦਿਨ ਰਾਤ ਬੇਥਾ ਜਾ ਰਿਹਾ ਦੇਖ ਬਿਨਾ ਜੇ ਉਸ ਜਾਏ। ਮੈਂ ਪਈ ਨਹੀਂ بارش ਪਈ ਦੀ ਬੜੀ ਖੇਤੀ ਐ। ਤੇ ਦਿਨ ਰਾਤ ਸੇ ਤੇ ਜ਼ੁਕਰੇ ਕਿ ਰਾਤ ਨੂੰ ਵੀ ਜ਼ੁਕਰੇ ਤੇ ਜ਼ੁਕਰੇ। ਨੁਕਸਾਨੇ ਹੋ ਰਿਹਾ ਦਿਨ ਰਾਤ। ਹਾਂ ਗੋਵਿੰਦ ਤੇ ਜਨਮ ਬੈਠੇ ਸਭ ਕਾਮ ਜੋ ਕਿਰਪਨ ਕੇ ਨਿਰਾਰਥ ਦਾ ਕਹਿੰਦੇ ਵਿਰਥਾ ਕਰਦਾ ਨਹੀਂ ਤੋ ਕੇ ਜਦੀ ਵੇਗ ਮੈਂ ਜੋ ਖੇਤੀ ਗੱਲ ਕੀ ਹੈ ਕਹਤੇ ਜੇ ਗੋਵਿੰਦਾ ਭਜ ਜੇ ਗੋਵਿੰਦ ਨਾਲ ਜੁੜ ਰਿਹਾ ਤੂੰ ਭਜ ਜੁੜ ਲੂ ਨੂੰ ਕਹਿੰਦੇ ਨੇ ਭਜੋ ਗੋਵਿੰਦ ਭੂਲ ਮਤ ਇੱਥੇ ਭਜੋ ਗਿਆ ਜੀਦਾ ਭਜਨ ਕਰੀਦਾ ਉਹ ਨਾਲ ਜੁੜਤੇ ਖਰੀਦਾ ਜੇ ਜੁੜਿਆ ਨਾ ਭਿੰਦਾ ਜਿਹੜਾ ਜਿਹਦਾ ਜਿਹਦਾ ਫਤਲਵਾ ਜੇ ਦਾ ਅਸੀਂ ਜਪ ਤਪ ਕਰਦੇ ਆ ਉਹਦੇ ਨਾਲ ਸਾਡਾ ਪ੍ਰੇਮ ਆਉਣਾ ਚਾਹੀਦਾ ਪ੍ਰੇਮ ਕਦੇ ਜੋੜਦਾ ਨਹੀਂ ਹੈ ਪ੍ਰੇਮ ਜੋੜਦਾ ਨਹੀਂ ਬਰੇ ਜੁੜਿਆ ਹੋਣਾ ਚਾਹੀਦਾ ਪ੍ਰੇਮ ਜੋੜਨ ਵਾਲੀ ਚੀਜ਼ ਹੈ ਜੇ ਗੋਵਿੰਦਨ ਨਾਲ ਆਪਣੇ ਉੱਤਰ ਆਪਣੀ ਤਰ੍ਹਾਂ ਆਤਮਾ ਨਾਲ ਜੁੜ ਕੇ ਨਹੀਂ ਰਹਿੰਦਾ 24 ਘੰਟੇ ਤਾਂ ਪਾ ਜਦ ਨਹੀਂ ਹੋ ਰਿਹਾ ਤੇਰੇ ਮਾਂ ਦਾ ਬਾਹ ਡੋਲਦਾ ਫਿਰਦਾ ਮਾਂ ਟਿਕਦਾ ਕਿ ਤੁਸੀਂ ਬਾੜਾ ਕਿਉਂ ਫੇਰਦੇ ਨਹੀਂ ਅੰਦਰ ਮਾਂ ਰਹੇ ਤਾਂ ਫੇਰਦੇ ਮਾਲਾ ਫੇਰ ਦੇ ਕਹੇ ਕਿ ਮੈਂ ਮਾਲਾ ਫਿਰਤਾ ਤੇ ਨਾ ਟਿਕਦਾ ਦੀ ਤਾਂ ਹੀ ਕਹਣਾ ਉਹ ਮਾਂ ਟਿਕਣ ਵਾਸਤੇ ਮਾਲਾ ਫੇਰਦੀ ਹੈ ਜੇ ਮਾਂ ਟਿਕਦਾ ਬਾ ਕੋਈ ਫਰਕ ਨਹੀਂ ਪਾ ਸਕਲੇ ਮਾਲਾ ਜਦੋਂ ਵੀ ਇਹ ਕਹਿੰਦੇ ਨਹੀਂ ਨਹੀਂ ਹੈ ਪਰ ਮਾਲਾ ਨਾਂ ਮਨ ਚ ਕਰਕੇ ਸੋ। ਉਹ ਮਾਲਾ ਸੋਹਰੇ ਜਿੱਦੂ ਮੈਂ ਦੇਖਦਾ। ਉਹ ਸਿਵਲ ਨੀ ਵਾਲਾ ਨਹੀਂ ਹੈ। ਕਬੀਰ ਭੇਰੀ ਸਿਵਾਂ ਨਹੀਂ ਰਸਨਾ ਉੱਪਰ ਰਾਮੇਦਨ ਮਟਕ। ਸਿਵਾਂ ਨੇ ਕੀ ਹੁੰਦੀ ਹੈ ਚੇਤਾ ਵੀ ਚੀਰਨਾ ਹੈ। ਗੋਵਿੰਦ ਕੋਰ ਨਾਲ ਇਹ ਜਾਣਕਾਰੀ ਹੁਣ ਚਾਹੀਦੀ ਉਹਨਾਂ ਛੁੱਟ ਕੇ ਜਾਵੇ। ਜਦੋਂ ਨਾਲ ਛੁੱਟ ਕੇ ਰਹੂਗਾ ਝੂਠ ਨਹੀਂ ਬੋਲਦਾ। ਕਿਹਦਾ ਹੱਕ ਨਹੀਂ ਹਾਂਦਾ ਪੁਖਾਰਾ ਨਹੀਂ ਦੁੱਤਾ ਉਹ ਕਿਵੇਂ ਹਾਂਦਾ ਜੇ ਹਾਜ਼ਰ ਆਜੇ ਸਮਝੇ ਪਰਮੇਸ਼ਰ ਨੂੰ ਇਹ ਗੱਲ ਤਾਂ ਬਗਦਦਾ ਹੀ ਗੱਲ ਕਰਦਾ ਹੀ ਆ ਜਿਹਾ ਕਹਿੰਦਾ ਵੇਸ ਕੋਈ ਨਹੀਂ ਹੈ ਇਸ ਕਰਕੇ ਗੋਵਿੰਦ ਪਛਨੂ ਜੇ ਗੋਵਨ ਤੋਂ ਜੁੜੇ ਤੇ ਬਿਨਾ ਉਹਨੂੰ ਹਾਇਰ ਨਾਲ ਤੇ ਬਿਨਾ ਜਿੰਨੇ ਕੰਮ ਕਰਦਾ ਉਹਾਰੇ ਬਥਰ ਹੈ। ਉਹ ਤੇ ਸਭ ਕਰਦਾ। ਹਾਂ। ਚਾਹੇ ਕੁਝ ਵੀ ਅਸੀਂ ਕਹਿੰਦੇ ਵਧੀਆ ਅਸੀਂ ਦੇਉਂਦਾ। ਗੁਰਬਾਨੀ ਨੂੰ ਬਥਰ ਕਰੀਏ ਉਹ ਵੀ ਕੰਮ ਆ ਗਿਆ। ਸਾਫ ਦੇ ਨਾਲ ਇਹਦਾ ਕੋਈ ਸ਼ਰਤ ਨਹੀਂ ਆ ਕਿ ਤੂੰ ਕੰਮ ਕਰਨਾ। ਜਿੱਥੇ ਸਭ ਕੰਮ ਕਰੇ। ਕਿੰਨਾ ਇਮਾਨਦਾਰੀ ਦਾ ਖ਼ਬ ਹੋਵੇ। ਕਿੰਨੀ ਹਮਤਤਰੀ ਦੀ ਤੁਮਾਈ ਕੋ ਵਾਲਾ ਅਸਲ ਹਾਇਦਮ ਆਇਆ ਹੀ ਹਾਇਦਮ ਦਾ ਬੋਧਾ ਉਸੇ ਬੜੀ ਨਹੀਂ ਹੋਇਆ ਪਰਮਾਤਮਾ ਦਾ ਬੋਧਾ ਬੜੀ ਨਹੀਂ ਹੋਇਆ ਇਹ ਅਪਰਾਧ ਹੈ ਧਰਮ ਦੀ ਦੁਨੀਆ ਜਿਮੋਦੋ ਓਗਣ ਓਗਣ ਨਾ ਛੱਡਿਆ ਨਹੀਂ ਬਸ ਓਗਣ ਦਾ ਛੱਡਿਆ ਨਹੀਂ ਆ ਓਗਣ ਤੇ ਓਗੜ ਛਾੜਿਆ ਜੇ ਬਈ ਮਨ ਦੀ ਫਿਰ ਓਗਣ ਤੇ ਆਪਣਾ ਫਿਰ ਉਹ ਇੱਕੋ ਤਾਂ ਹੈ ਉਹ ਇੱਕ ਦਾ ਹੁੰਦਾ ਕੋਈ ਚਾਰ ਇੱਕ ਚਾਰ ਦਾ ਸਕੇਲ ਹੁੰਦਾ ਚਾਰ 4 ਚਾਰ ਉ 4 4 4 ਜੇ ਬੇਮੰਨੀ ਦੀ ਕਮਾਈ ਕਰਨਾ ਜੀਏ ਤਾਂ 4 4 16 ਬਣਾਵਰਾ ਹੋ ਜਾ 4 4 ਹੋ ਜਾ ਚੜੇ ਚ ਬੰਦਾ ਬੰਦਾ ਦੇ ਆ ਫਿਰ ਨਗੇਟੇ ਵਿੱਚ ਚੜੂ ਚੜੂ ਗਏ ਸੁਰੂ ਆ ਜਮਕਲਾਂ ਵੱਧੋ ਜਾਂ ਤਾਂ ਕ੍ਰੂਪ ਚੜਾ ਲਓ ਚਬਗਣ ਇਹ ਆ ਫਿਰ ਰੂਪ ਕੋਈ ਜਾਂ ਚਾਰ ਚਾਰ ਘੜ ਕੇ ਘਟਦਾ ਹੈ ਜ਼ਬਰ ਵੀ ਚਾਰ ਚਾਰ ਘੱਟ ਗਿਆ ਹੈ ਵਿਚੋਗੇ ਦਾ ਹੀ ਚੱਲੂਗਾ ਇੱਥੇ ਚਬਗਣ ਮਾਨ ਕੀ ਹੋਇਆ ਇਹ ਸਾਰੇ ਉਹਨੇ ਹਾਜ਼ਰੇ ਸਣੇ ਬੈਠੇ ਨੇ ਕਿ ਪਕਰ ਨਹੀਂ ਫੋਟਵਾਦੇ ਕਿਉਂ ਨਿਹਾਲ ਖਾਲਾ ਵੇਖੀ ਜਿਵੇਂ ਚੌਕਣ ਦੇ ਹੱਥ ਹਾਂ ਚੌਕਣ ਚੌਕਣ ਨਾਲ ਬਾਹਰ ਚੱਲੂਗਾ ਵੀ ਇਦਾਂ ਹੀ ਕਰਦਾ ਤੇ ਜਾਂਦਾ ਵੀ ਇਦਾਂ ਹੀ ਹੈ ਜੂਆ ਜਾਂ ਹਾਰਦਾ ਨਾ ਹਾਰਦਾ ਵੀ ਜਾ ਬੰਦੇ ਵਿਚਾਰੇ ਉਹਦਾ ਜੂਆ ਪਾ ਹਾਰ ਰਹੇ ਆ ਇਹਦਾ ਜਿੱਤ ਰਹੇ ਆ ਤੇ ਬਾਕੀ ਹਾਲ ਮੈਂ ਜਿੱਤਲ ਨਾ ਰਹੇ ਤਾਂ ਕੋਈ ਹੁੰਦਾ ਕਿ ਕਿਨੇ ਹਾਲਾਂ ਦੂਰੇ ਜਿੱਤ ਰਹੇ ਆ ਜਿਨੀ ਹਾਨੀ ਉਹਨੇ ਗਾਲ ਬਰਬਰ ਹੈ ਗੱਲ ਜਲਦੀ ਉਹ ਚਬਗਣ ਬੰਨਾ ਓਏ ਸਾਰੇ ਆਦ ਰਖਣੇ ਬੰਨ ਨ ਦੁਬਾਰਾ ਵੀ ਕੀ ਗੱਲ ਸੀ ਤੇ ਬੰਦ ਕਾ ਚੁੱਪ ਕਰ ਚੁੱਪ ਚਪ ਕਰਣਾ ਪੈਣਾ ਸੱਤਾ ਮਤਲਬ ਹੈ ਥਾਲੀ ਥਾਲੀ ਗੱਲ ਦਾ ਕੋਈ ਮਤਲਬ ਹੈ ਇੱਕ ਦੇ ਹੱਥ ਚਾਰ ਉੱਪਰ ਚਾਰੇ ਨੇ ਚਾਰੇ ਨੇ ਚਾਰੇ ਉੱਪਰ ਨੇ ਚਾਰ ਮਾਣ ਉਹ ਵੀ ਖੱਬੇ ਪਾਸੇ ਨੂਡੇ ਖਬਰ ਪਾਸੇ ਰਖਵਾ ਤਾਂ ਹੀ ਮਾਰੇ ਹੋਇਆ ਉਹ ਜੋ ਉੱਗਣੇ ਨੇ ਜਾ ਰਹੇ ਹਾਂ ਜੀ ਗੋਵਿੰਦ ਭਜਨ ਬਿਨ ਬਿਨ ਗੋਵਿੰਦ ਤਾਂ ਗੋਵਿੰਦ ਹੀ ਹੈ ਗੋਵਿੰਦ ਗੋਵਿੰਦ ਭਜਨ ਬਿਨ ਬਿਨ ਦਿੱਥੇ ਸਭ ਕਾਮ ਗੋਵਿੰਦ ਭਜਨ ਬਿਨ ਬਿਨ ਬਰਚੇ ਸਭ ਕਾਮ ਕੰਮ ਕੋਈ ਵੀ ਹੋਵੇ ਜਿਵੇਂ ਕੋਈ ਕਿੱਦਾਂ ਹੀ ਲੰਗਰ ਵੀ ਲਾਉਂਦਾ ਬਾੜਾ ਵੀ ਫੇਰਦਾ ਗੋਵਿੰਦ ਭਜਨ ਜਿੱਦੇ ਉਹ ਨਾਲ ਜੁੜਿਆ ਨਹੀਂ ਹੋਇਆ ਅੰਦਰ ਫੇਰਦਾ ਵਿਖਾ ਰਿਹਾ ਫਿਰ ਉਹ ਕਹਿਣ ਦਾ ਮਤਲਬ ਹੈ ਕਿ ਕੋਈ ਧਰਮ ਆਪੇ ਕਮਾਨ ਨਹੀਂ ਗਿਆ ਆ ਇਹ ਉਹਨਾਂ ਲੋਕਾਂ ਨੂੰ ਗੁਰਬਾਨੀ ਨੇ ਜਿਹੜੇ ਬਹੁਤ ਹੀ ਧਾਰਮਿਕ ਤੇ ਬੁਜ਼ੁਰਗ ਆ ਜਿਹਦੇ ਉਹਨੂੰ ਰੁਕਦੇ ਆ ਅਰ ਯਾਦ ਕੋਈ ਆਦੀ ਸੀ ਜਿਹੜੇ ਆਦੀ ਬਹੁਤ ਹੀ ਨਾਲ ਮਾਰਾ ਫਿਰਦੇ ਸੀ ਧਰਮ ਦਾ ਕਰਮ ਕਰਦੇ ਸੀ ਉਹਨਾਂ ਨੂੰ ਬੁਦੇਸਾ ਬਾਕੀ ਜੱਤਾਂ ਨੂੰ ਹੀ ਬੁਦੇਸਾ ਯਾਰ ਬਾੜ ਦੀ ਪੜਾਈ ਨਾ ਚਾਹ ਤੁਸੀਂ ਪੜਾਈ ਵਾਲਾ ਬਡੇ ਨੂੰ ਪੜਾਵਾਂਗੇ ਪਹਿਲੀ ਵਾਲੇ ਨੂੰ ਪੜਾਵਾਂਗੇ ਪੜ੍ਹਿਆ ਲੂਕਾ ਮੈਂ ਪੜਾ ਦਾਂਗੇ ਅੱਲਾਮੇ ਉਹਦੇ ਸਕੂਲ ਤੋਂ ਪੂਰੀ ਲੈ ਕੇ ਆਉਂਦੇ ਇਹ ਤਾਂ ਬਿਲਕੁਲ ਜਿਹੜਾ 12ਵਾਂ ਪਾਸ ਹੈ ਰੁਕ ਉਹਨੂੰ ਫਿਰ ਉਦੋਂ ਹਾਂ ਕਿ ਜ਼ਰੂਰੀ ਆਦਾ ਹੈ ਜਿਹੜੀ ਕਲਾਸ ਦੀ ਪੜਾਈ ਆ ਛੱਲੇ ਦੀ ਤਾਂ ਪੜ੍ਹਿਆ ਨਹੀਂ ਜਾਈਂ ਨੀਂ ਦੇ ਇਹ ਉਹ ਧਰਮਤ ਨੇ ਜਿਹੜੇ ਉਹਨੂੰ ਦੂਏ ਰੋਣ ਉਹ ਉਹਨਾਂ ਵਾਸਤੇ ਲੋਹ ਠੰਡ ਠੱਲੇ ਉਹਨਾਂ ਖਤਰੋ ਹੀ ਫੁੱਲਾ ਲਈ ਐ ਲੱਭੀ ਤੂੰ ਕੋਈ ਨੰਬਰ ਲਈਆ ਤੂੰ ਬਈਓ ਕਰ ਲੈ ਤੂੰ ਉਹ ਕਰ ਲੈ ਚਲੋ ਬਈਓ ਬਈਸਾ ਕਰ ਲੈ ਤੋ ਠੀਕ ਐ ਉਹਨਾਂ ਦਾ ਸਕੂਲ ਹੈਗੇ ਜਿਹਾ ਲੱਗ ਇਹ ਤਾਂ ਫਾਈਨਲ ਸਕੂਲ ਹੈ ਗੋਬਿੰਦ ਭਜਨ ਬੈਠੇ ਸਭ ਕਾਮ ਜੋ ਕਿਰਪਨ ਕੇ ਨਿਰਾਥ ਸਦਾਮ ਗੋਬਿੰਦ ਭਜਨ ਵੇਨ ਬੈਠੇ ਸਭ ਕਾਮ ਗੋਬਿੰਦ ਭਜਨ ਤੋਂ ਬਣਾ ਕੰਪਿਊਟਰ ਤੋਂ ਸਦੈਂ देखो का को बहुत अपने धर्म कर्म में बैठे रहे। ये कर्म धर्मले ना वो ਨੇ हैं। तो का मौसी ने या पड़ी। आज जन्मदा इजा है ना अपना मतलब टारगेट पूरा नहीं हो लो। फिर ये टारगेट पूरा होना बैठेगी। ਜੇ ਹੁਣ ਪਾਸ ਨਹੀਂ ਹੋਇਆ ਉਹ ਨੰਬਰ 2 ਕੱਟਣਾ ਜਾਂ 10 ਕੱਟਣਾ ਕੋਈ ਫਰਕ ਨਹੀਂ ਪੈਂਦਾ ਫਿਰ ਉਹ ਇਹਨਾਂ ਨੰਬਰ ਨਹੀਂ ਪੁੱਛੀ ਦਿੰਦੇ ਕਿ ਕਿ ਪਾਸ ਹੋਣ ਤੇ ਜੀਰੋ ਵਾਲੇ ਵੀ ਬਰਾਬਰ ਹੀ ਹੁੰਦੇ ਉਹ ਸਭ ਬਰਾਬਰ ਹੀ ਹੁੰਦੇ ਸਮਝਾ ਨਹੀਂ ਕੋਈ ਦੌੜਾ ਜੋ ਕਲਪਨ ਕੇ ਨਿਰਾਸ਼ਦਾਨ ਜੋ ਕਲਪਨ ਕੇ ਨਿਰਾਸ਼ਦਾਨ ਜਿਹੜਾ ਹੁਣ ਖਜੂਸ ਹੈ ਉਹ ਤਾਂ ਤੇ ਲੈ ਕੇ ਕੁਝ ਨਹੀਂ ਆਇਆ ਜਾਂ ਜੇ ਉਹਨੂੰ ਪਤਾ ਹੀ ਹੋਵੇ ਉਹ ਕਿਰਪਨ ਹੈ ਕਿਰਪਨ ਦਾ ਹੋਰ ਹੁੰਦਾ ਹੈ ਜਿਹੜਾ ਸੂਤ ਹੈ ਨਾ ਸੂਤ ਤੇ ਫਿਰਪਨ ਫਿਰਪਨ ਕਹਿੰਦੇ ਉਸ ਨੂੰ ਜਿਹੜਾ ਲੋੜੀ ਲੈਦਾ ਜਿਹਦੇ ਕੋਲ ਨਾਂਮ ਤਾਂ ਨਹੀਂ ਉਹਨੂੰ ਕਿਹਾ ਨਾ ਵੀ ਉਹ ਸੰਭਾਲ ਆ ਉਹ ਕਿਰਪਨ ਕਿਰਪਨ ਜੇ ਉਹਦਾ ਕੋ ਗਿਆਨ ਹੈ ਵੀ ਕਰਤੋਂ ਕਿਰਪਨ ਹਰ ਉਹਦਾ ਕਹਾਵਾ ਥੋੜਾ ਫਰਕ ਹੈ ਜਿਹਨੇ ਜਨਿਆਬੀ ਗਿਆਨ ਹੈ ਉਹਦਾ ਕੋ ਅਜੀਬੀ ਡੀਸਿਲ ਹੈ ਗਿਆਨ ਸੋਮ ਵੀ ਕਰਤੋਂ ਕਿਰਤੋਂ ਸੁਭੂ ਹੋਮਾਨ ਨਾਰਸ ਦਾਲੋ ਉਹਨੂੰ ਤਾਂ ਹੈਗਾ ਪਰ ਅਰਥ ਉਹ ਆਪਣੇ ਰਾਨ ਵਾਲਾ ਨਹੀਂ ਹੈ ਤਾਂਹੀਓ ਕਬੂਨ ਐਸੇ ਚੱਲ ਰਹੀ ਜੇ ਆਪਣੇ ਟਾਰਗੇਟ ਵਾਸਤੇ ਜ਼ਰੂਰ ਅਰਥ ਉਹ ਉਦਾਰ ਕੋਈ ਨਹੀਂ ਉਹ ਅਰਥ ਇੱਥੇ ਜਾਂਦਾ ਉਹਦਾ ਧਰਮ ਅਰਥ ਅਰਥ ਜਿਹੜਾ ਲਫ਼ਜ਼ ਹੈ ਨਾ ਉਹ ਜਿਹੜਾ ਅਰਥ ਉਹਦਾ ਹੈ ਨਾ ਭਈ ਇੱਕ ਸਦਾਰਥ ਅਰਥ ਸਾਡੇ ਨਾਲ ਤਾਮ ਦਾਮ ਦੀ ਉਤਰ ਵੈਸੇ ਤੇ ਅੱਗੇ ਹੈ ਉਹ ਜਿਹੜਾ ਅਰਥ ਕਹਤਾ ਤੁਸੀਂ ਜਿਹੜਾ ਚੌਥਾ ਪਦਾਰਥ ਹੈ ਕਿਵੇਂ ਜੋੜ ਲਵਾਂ ਕਿ ਵਿੱਚ ਤੁਸੀਂ ਤੁਸੀਂ ਜੋੜੋਗੇ ਕੱਲ ਇਹ ਨਹੀਂ ਵੀ ਉਹ ਪਦਾਰਥ ਕੀ ਹੋਇਆ ਕੱਲ ਹੋਰ ਵੀ ਸਾਬ ਸੁੰਦਾ ਜਿਹੜਾ ਅੱਧਾ ਦੁਗੱਬੀ ਪੈਸਾ ਭਾਇਆ ਹੈ ਭਾਇਆ ਤਿਆਗ ਲਈਏ ਤੁਸੀਂ ਜਦੋਂ ਪ੍ਰਾਸ ਬੰਦੇ ਹੋ ਗੋਡ ਜੋਖ ਬੰਦੇ ਹੋ ਠੀਕ ਹੈ ਗੋਡ ਜੋਖ ਹੈ ਜਦੋਂ ਗੋਖ ਬੰਦੇ ਹੋ ਤਿਆਗਦੇ ਦੀ ਤੁਸੀਂ ਕਿਵੇਂ ਮਰਦੇ ਹੋ ਰਾਮ ਰੋਬੀ ਉਹ ਵੀ ਛੱਲੀ ਹੈ ਜੀ ਫਰੂਤੀ ਕਰ ਮੈਂ ਤਾਂ ਕਿ ਅਦਬ ਚਾਹਾਂਦੀ ਭਈ ਬਰਾਉਣੀ ਸੂਚੀ ਤੇ ਇਸਰੇ ਸ਼ਾਇਦ ਅਧੀ ਚ ਨਾਲੀ ਹੈ ਦੋ ਪਦਾਰਸ ਦਿਲਦੀ ਹੈ ਚੜਵੋ ਵੀ ਨਹੀਂ ਦੋ ਪਦਾਰਸਾਂ ਦੀ ਗੱਲ ਕਰਕੇ ਕੋਈ ਨਹੀਂ ਉਸਦੀ ਦਾ ਗੱਲ ਕਰਦੇ ਨਾ ਆਦਰ ਤੋਂ ਦੀ ਸੀ ਗੱਲਾਂ ਬੁਲਤੀ ਬੇਉਂ ਬੇਰ ਬੇਰ ਦੇ ਤੇ ਮਰੇ ਰਗੜੂ ਕੇ ਥੇ ਹਾਂਜੀ ਚੰਦਾਲੀਆ ਅਦਮ ਚੰਦਾਲੀ ਭਈ ਬ੍ਰਾਹਮਣੀ ਕੁਝ ਗੱਲਾਂ ਹੈਂ ਕਿਆ ਕਹਿ ਦਿੰਦੀ ਐ ਅਦਮ ਚੰਦਾਲੀ ਜਿਹੜੀਆਂ ਖੇ ਜੇ ਤੁਸੀਂ ਉਹ ਗੱਲਾਂ ਕਮਾ ਲਓ ਤੁਸੀਂ ਗਾਹ ਡਿੱਗੜ ਵੀ ਸਕਦੇ ਹੋ ਜਦੋਂ ਕਵੀਰ ਦੋਜਾ ਕਲੇਣਾ ਵਿੱਚ ਬਿਲਕੁਲ ਚੰਡਾਲੀ ਨਹੀਂ ਇਹ ਬਿਲਕੁਲ ਚੰਡਾਲੀ ਹੋਵੇ ਕਿਸ ਨੂੰ ਬਹਾਨਾ ਕੰਮ ਦਾ ਉਹਨੂੰ ਮਿਲ ਆਪਾਂ ਅੱਜ ਉਹ 25 ਰੰਗ ਤੋਂ ਰਿਵੀ ਵਸ ਸਕਦੇ ਜੇ ਤੁਸੀਂ ਸਿਆਣੇ ਹੋ ਬੱਜੋਗੇ ਜੇ ਤੁਸੀਂ ਬਿਲਕੁਲ ਮੋਰ ਖੂਨ ਨਾ ਬਜਾਓ ਮੋਰ ਖੰਗੋਲ ਫਰਗੇ ਜੇ ਅੱਜ ਹੈ ਸਿਆਣੇ ਹੋ ਫਿਰ ਬੱਜੋ ਮੈਨੂੰ ਸੁਖ ਪਰਚੋ ਅੰਮੀ ਮੈਂ ਦਵਾਈ ਕਰਨਾ ਹੈ ਨਾ ਸੁਖੋ ਇਹ ਵੀ ਲੋਗ ਇਹਦਾ ਆਹ ਕੁੜੀਆਂ ਤੁਸੀਂ ਕਦ ਦਮੀ ਸਵਾਇ ਕਰਦੇ ਤਾਂ ਦਮੀ ਪੂਰਾ ਜਾਂ ਫਾਇਦਾ ਕੀ ਹੋਇਆ ਵਾਈ ਵੱਲੋ ਕੋਈ ਈ ਗੱਲ ਨਾ ਕੋਈ ਈ ਗੱਲ ਨਾ ਤਰਫ ਦੇ ਸੱਜੇ ਤੋਂ ਪ੍ਰਾਪਤ ਕੀ ਹੋਇਆ ਕਿਉਂ ਨਹੀਂ ਕਹਿਣੇ ਜਾਂਦੇ ਮਾਰਾ ਕੋਈ ਹੋਰ ਗੱਲ ਦੱਸੋ ਮਾਰਾ ਮਾਂ ਨਹੀਂ ਗੱਲ ਬੰਦੀ ਜਿਹੜੇ ਇਹ ਕਹਿਣ ਲੱਗ ਜਾਂਦੇ ਵਜਾ ਤੜੇ ਜਿਹੜੇ ਇਹ ਨਹੀਂ ਕਹਿ ਦੋਨ ਬੱਦ ਬੱਸ ਸੋਕੇ ਇਹ ਤਰਕ ਨਾਲ ਤੇ ਪਰਵਿਰਚ ਜੇ ਤੋ ਤਰਕ ਵੀ ਨਾ ਪੈਦਾ ਹੋਇਆ ਸਵਾਲ ਨਹੀਂ ਪੈਦਾ ਹੋਇਆ ਇਹ ਬਾੜਾ ਮੈਂ ਜਿਹਨੂੰ ਇਹਨਾਂ ਚਾਹੋਗਾ ਰਿਜ਼ਲਟ ਕੁਛ ਆਇਆ ਨਹੀਂ ਮੈਂ ਤਾਂ ਬੇਕੁਪਣਾ ਰਹੇ ਹਾਂ ਕਿਆ ਮੈਨੂੰ ਦਵਾਈ ਦੀ ਲੱਗ ਰਹੀ ਕਿਸੇ ਵਾਸਤੇ ਫਟਾਉ ਮੇਰੇ ਬਾਤ ਨਹੀਂ ਬਟ ਚਲੋ ਮੈਂ ਕਾਦੇ ਕਾਦੇ ਤੁਹੇ ਮੈਂ ਤੂੰ ਦੱਸੋ ਵੀ ਬੈਂਕੀ ਤੇਰਾ ਮੈਨੂੰ ਨਹੀਂ ਬਤਾ ਆਪਰੇ ਕੋਟਾ ਲਬੀ ਅਗੋ ਕੀ ਜਵਾਬ ਦਸ ਹੱਥ ਖੜੇ ਕਰੂਗਾ ਵੀ ਮੇਰੇ ਵਾਸਤੇ ਕਰ ਜੀ ਤੂੰ ਤੇ ਹੋ ਚਲਾ ਜਾ ਜਦੋਂ ਅੱਗੇ ਸੰਤਾ ਕੋ ਜਾਦੇ ਨੇ ਸ਼ਿਕਰਦੇ ਹੈ ਕਹਿੰਦੇ ਅਜੀ ਨਾ ਹੱਥ ਖੜੇ ਕਰ ਦੋ ਪਰ ਵੀ ਤੂੰ ਬਾਹਰ ਜਾ ਹੁਣ ਕਾਹ ਜਾਤਾ ਜਾਂਦਾ ਜਾਂਦਾ ਜਾਂਦਾ ਯੋਗ ਉਹਨਾਂ ਕੋਲ ਅੱਜਾ ਗਿਆ ਰਿਹਾ ਉਸੇ ਦਾ ਕੋਈ ਬੁੱਢਾ ਨਹੀਂ ਮੜਿਆ ਆਪ ਹੀ ਬਹ ਪਹੜੀਓ ਗਿਆ ਮਿਸਯੂਜ਼ ਕਰ ਲਿਆ ਗਿਆ ਨੂੰ ਗਿਆਨ ਨੂੰ ਬਿਸਰ ਕਰ ਲਿਆ ਵਿੱਚ ਦੁਗੜਾ ਲਿਆ ਲਿਆ ਆਸਰਤ ਕਿ ਦਿਆ ਪਾਸਰ ਹੁਬਤ ਆਉਰੇ ਪਾਸੇ ਲੱਗੋ ਵਿਸ਼ੇ ਨਹੀਂ ਕਰਦਾ ਆਉਂਦਾ ਹੋਰ ਉਹ ਵੀ ਇਹ ਭਜਨ ਬਿਨ ਬੈਠੇ ਸਭ ਕਾਮ ਇਹ ਧਰਮ ਦੇ ਖੰਮਾਂ ਦੀ ਗੱਲ ਹੈ ਇਹ ਧਰਮ ਚਾਤ ਵੀ ਲੱਗੇ ਨੇ ਉਹਨਾਂ ਦੀ ਗੱਲ ਹੋ ਰਹੀ ਆ ਬਾਕੀ ਦੁਨੀਆਂ ਦੇ ਲੋਕਾਂ ਦੀ ਕੋਈ ਗੱਲ ਨਹੀਂ ਜੋ ਕલ્પਨ ਕੇ ਨਾ ਕਰਨ ਸਾਰੇ ਹਿਉ ਹੈ ਉਹ ਤਾਂ ਧਰਮ ਵਾਲੇ ਕਬੂ ਬਿਥੇ ਹੈ ਨਾ ਸਰ ਆ ਜੀ ਦੋਈ ਖਾ ਰੀ ਰਹਾ ਉਹ ਤਾਂ ਰੋਣਾ ਹੈ ਜੀ ਖਾ ਰਿਆ ਦੋਈ ਅੱਜ ਪਰਹੇਜ ਵੀ ਕਰ ਰਹਾ ਪਰ ਰਾਮ ਨਹੀਂ ਆ ਰਹਾ ਉਹ ਜਿਹੜਾ ਕੰਮ ਕਰ ਰਹਾ ਉਹ ਤਾਂ ਉਹ ਵਰਤਾ ਕਰ ਕੋਕੜ ਧਰਮ ਕਛੂ ਫਲ ਇਹਦਾ ਫਾੜੀ ਹੋ ਜਾਣਾ ਧਰਮ ਦੇ ਵਿੱਚ ਇਸ ਤਰ ਗੁਲੇ ਉਹ ਫੋਕੜ ਕੋਕੜ ਧਰਮਾ ਕਛੂ ਫਲ ਨਾ ਜੇ ਫਲ ਪ੍ਰਾਪਤ ਨਹੀਂ ਹੋਇਆ ਉਹ ਕਹ ਕੁੱਝ ਤਾਂ ਗੀਣਾ ਉਹ ਤੁਹਾਨੂੰ ਦੱਸਿਆ ਉਹ ਕਹ ਮੇਰੇ ਤਾਂ ਭਾਈ ਬਿਰੂ ਕੋ ਪ੍ਰਾਪਤ ਨਹੀਂ ਹੋਇਆ ਤੂੰ ਦੱਸ ਤੇਨੂੰ ਕੀ ਪ੍ਰਾਪਤ ਹੋਇਆ ਹਾਂਜੀ ਕਿਰਪਨ ਕੇ ਨਿਰਾਥ ਦਾਂ ਜਦੋਂ ਜਿਹੜਾ ਕਛੂ ਸੁਦਾ ਕੋਈ ਅਜਨਖਿਆ ਮਨ ਦਾ ਉਹਨੇ ਕਿਸ ਨੂੰ ਦੇਣਾ ਨਹੀਂ ਆ ਵਰਤਨ ਦੀ ਦੱਬ ਗਈ ਵਰਤਨ ਬਲ ਦੇ ਵਿੱਚ ਫਿਰ ਚੱਲ ਗਿਆ ਆ ਆਪ ਬਤਨ ਆਪ ਬਤਨ ਨਹੀਂ ਕਰਦਾ ਕੀ ਫਲਾ ਹੈ ਉਹਦਾ ਤਾਂ ਉਹ ਜੀ ਹੈ ਤਨ ਤਨ ਤੇ ਜਨ ਜੇ ਘਟ ਬਸਿਓ ਹਰ ਨਾਉ ਦੇਖੋ ਪਹਿਲਾਂ ਕੀ ਆਇਆ ਸੀ ਇੱਥੇ ਜਿਹੜੇ ਦੇ ਤਨ ਤੇ ਜਨ ਜਿਦ ਘਟ ਬਸਿਓ ਹਰ ਜੇ ਨਾਮ ਬਥਿਆ ਹੋਇਆ ਤਾਂ ਇਹ ਸਿਮਰਨ ਚੱਲਦਾ ਜੇ ਨਾ ਬਿਸਰਿਆ ਹੋਇਆ ਸਰ ਕੋਵਨ ਤੇ ਭਜੰਤੋ ਉਹ ਵੇਲੇ ਨਾ ਜੁੜਿਆ ਜੀ ਬੇਖਾ ਨਾਮ ਬਿਨਾ ਤਾਂ ਨਾਮ ਦਾ ਸਾਧ ਸੰਤ ਨਾਮ ਤੇ ਬਿਸਰਿਆ ਨਾ ਜੀ ਨਾਮ ਤੇ ਬਿਨਾ ਜਿੰਨਾ ਚਿਰ ਨਾਮ ਦੀ ਹੋਂਦ ਚੱਲਣਾ ਹੈ ਆਪ ਜੀ ਜਾਣੇ ਅਨੇ ਫੋਟੇ ਘਰੇ ਦੀ ਪਛਾਣ ਨਹੀਂ ਮੋਟੇ ਘਰ ਦੀ ਵਿਚਾਨ ਕਰਦਾ ਤਾਂ ਕਿਤੇ ਪਤਾ ਲੱਗਦਾ ਵੀ ਇਹ ਸਭ ਠੀਕ ਹੈ ਗਲਤ ਹੈ ਇਹ ਆਪਣਾ ਨਾ ਦੇਖਦਾ ਵੀ ਮੈਨੂੰ ਹੀ ਬਾਈ ਤੋਂ ਰੋਂਦਾ ਕਦੀ ਹੁੰਦਾ ਹਾਂਜੀ ਤਨ ਤਨ ਤੇ ਜੇ ਘਟ ਬਸਿਓ ਹਰ ਨੋਂ ਨਾਮਿਕ ਤਾਂ ਕੇ ਬਲ ਬਰ ਆਦਮੀ ਤਾਂ ਲੈ ਜੀਨਾਂ ਤੇ ਹੱਦ ਚ ਲੋ ਗਿਆਨ ਬੱਸਿਆ ਰਹੇ ਹਰ ਵਕਤ ਜਿਹੜੇ ਹਰ ਵਕਤ ਇਹ ਨਾਲ ਜੁੜੇ ਰਹਿੰਦੇ ਨੇ ਨਾਮ ਤਾਂ ਕੇ ਬਰ ਵਕਤ